बराछक पढोवे जी महला पहला हम्म कल कलवानी काम मद मनुवा पीवन हार क्रोध कटोरी मोह भरी पिलावा अहंकार मजलस कूड़े लबकी पी पी होए खवार करनी लाहन सत गुड सच सरा कर सार गुण मंडे कर सील केओ शर्म मास आहार गुरुमुखी पाईए नानका ਖੱਦੇ ਜਾਏ ਬੇਕਾਰ ਇਹ ਜਰਾਬ ਇਹ ਹੈ ਜਿਹੜੀ ਦੁਰਵਤ ਵੱਧ ਦਰ ਇਹ ਝੜਤੀ ਉਹ ਦੂਈ ਫੜਲੀ ਉਹਦਾ ਨੌਤਾਇਰਾ ਨੇ ਸੁਰਾ ਰੱਖਿਆ ਆਇਆ ਗ੍ਰੰਥਾ ਚ ਉਹਦਾ ਜਕਰ ਬਾਣੀ ਚ ਨਹੀਂ ਆਇਆ ਦੁਰਵਤ ਮਾਦੀ ਜੇ ਪੀਵਤੇ ਦੇਖ ਲਈਏ ਕੋਤਤਾ ਬਿਜਲੀ ਵਿਘੜੇ ਪਤਾ ਕੰਮ ਵੀ ਗੱਲ ਕਰਤੀ ਜ਼ਰੂਰ ਕਰਤੀ ਵੀ ਕਰਤੀ ਸੀ ਕਰਤੀ ਇਕੱਠੀ ਲਾੜੇ ਆਉਂ ਪਰ ਇਹ ਤਾਂ ਸਾਰਿਆਂ ਕੋਲੇ ਸੀ ਜਿਹੜੇ ਤੇਰੇ ਨੇ ਪਰੋਸ ਕੇ ਉਹ ਲਈ ਪਰਦੇ ਨੇ ਉਹਦੀ ਨੰਦ ਅਗਰੀ ਜਾਂਦੇ ਨੇ ਇਹ ਛੱਡ ਸਕਦੇ ਨਹੀਂ ਇਹ ਔਖੀ ਹੈ ਛੱਡਣੀ ਉਹ ਤਾਂ ਸੁਖੀ ਹੈ ਛੱਡਣੀ ਦੁਰਮਤ ਉਹ ਲ ਕੋਈ ਛੜਤ ਹੁੰਦਾ ਇਹ ਚੰਗਦਿਆਂ ਨੂੰ ਬੀਤੀ ਪਲਾਈ ਹੋਈ ਹੈ ਜਦੋਂ ਪਤਾ ਨਹੀਂ ਸੀ ਉਦੋਂ ਹੀ ਪੀੜ ਲਾਤੇ ਹੁਣ ਨਹੀਂ ਨਿਆਣੇ ਹੁੰਦੇ ਬਚਪਨ ਦੇ ਜਿਹੜੀ ਸਾਨੂੰ ਦੁਰਮਤੀ ਭਾਸ਼ਾ ਸਿਖਾਈ ਹੈ ਸਾਡੀ ਭਾਸ਼ਾ ਹੈ ਦੁਰਮਤ ਵਾਲੀ ਸਾਰੀ ਆਪਣੇ ਆਪ ਤੋਂ ਦੂਰ ਕਰਨ ਵਾਲੀ ਪ੍ਰਮਾਤਮਾ ਸਾਹ ਤੋਂ ਵੱਖਰੇ ਔਰ ਬਾਹਰ ਹੈ ਇਹੀ ਭਾਸ਼ਾ ਗੁਰੂ ਸਾਹ ਤੋਂ ਵੱਖਰੇ ਔਰ ਬਾਹਰ ਹੈ ਬਚਾ ਹੈ ਸਾਰੇ ਨੂੰ ਪੜਾਈ ਹੋਈ ਇਹ ਨਿਆਰੀ ਹੈ ਸਾਰੀ ਇਹ ਮੱਤ ਨਿਆਰੀ ਹੈ ਨਿਆਰੀ ਮੱਤ ਹੈ ਤਾਂ ਸਰਸਾ ਜਾ ਵੱਖਰੀ ਕਿਸਮ ਦੀ ਮੱਤ ਹੈ ਸੰਸਾਰ ਦੀਆਂ ਸਾਰੀਆਂ ਮੱਤਾਂ ਨਾਲੋਂ ਜੇ ਸੰਸਾਰ ਦੀਆਂ ਮੱਤਾਂ ਪੱਛਮ ਨੂੰ ਜਾਂਦੀਆਂ ਤਾਂ ਪੂਰਬ ਨੂੰ ਜਾਂਦੀ ਹੈ ਜੇ ਸੰਸਾਰ ਦੀਆਂ ਮੱਤਾਂ ਦੱਖਣ ਨੂੰ ਜਾਂਦੀਆਂ ਨੇ ਉੱਤਰ ਨੂੰ ਜਾਂਦੀਆਂ 180 ਡਿਗਰੀ ਤੇ ਐਗਜੈਕਟ ਉਠੀ ਗਿਆ ਉਲਟੀ ਰੇ ਮਨ ਉਲਟੀ ਰੇ ਸਾਖਤ ਸੋ ਕਰ ਉਲਟੀ। ਬਾਕੀ ਸਭ ਚਾਹ ਸਾਖਤਾਨੀ ਬਤਾਂ ਦੇ। ਸਾਖਤ ਕੋਣ ਹੈ? ਜਬ ਲਗ ਜਾਣੇ ਮੈਂ ਕੁਛ ਕਰਤਾ ਫਿਰਤਾ। ਸਾਖਤ ਸਿੱਖ ਤੇ ਉਲਟਾ ਸਿੱਖ ਸਾਖਤ ਤੇ ਉਲਟਾ। ਦੋਏ ਆਪਾ ਵਿਰੋਧੀ ਲਫ਼ਜ਼ ਨੇ। ਜਿਹੜਾ ਸਾਖਤ ਆ ਸਿੱਖ ਨਹੀਂ ਹੋ ਸਕਦਾ ਜਿਹੜਾ ਸਿੱਖਾ ਨੂੰ ਸਾਖਤ ਕੀ ਰਿਛੜਣੀ ਪਊਗੀ ਛੱਡ ਕੇ ਤਿਆਗ ਕੇ ਸਿੱਖਾ ਪਰ ਸਾਖਤ ਹੁੰਦੇ ਹੋਏ ਅਸੀਂ ਸਿੱਖਾ ਪ੍ਰੋਬਲਮ ਹੈ ਦੁਰਮਤ ਛੱਡੀ ਨਹੀਂ ਉਹਨੇ ਛੱਡਣੀ ਹੈ ਸਿੱਖ ਹੋਵੇ ਸਿੱਖ ਬੜੇ ਨੀ ਸੰਤ ਰਹਿ ਗਏ ਬੜਬੁਰੇ ਸੰਤਤਾ ਨਾਨਕ ਰੂਪੇ ਬਹਿਲਾ ਨੇ ਜਿਹੜੇ ਸੰਤ ਨੇ ਏ ਭੇਖ ਹੈ ਸਾਧਰੇ ਸਾਧ ਸਾਧਨਾ ਕਰਨ ਵਾਲੇ ਨੇ ਸ਼ਰੀਰ ਦੀ ਸਾਧਨਾ ਕਰ ਪਹਿਲਾ ਮੰਦੀ ਸਾਧਨਾ ਤੇ ਸ਼ੁਰੂ ਹੋਈ ਸੀ ਗੱਲ ਮੰਦੀ ਸਾਧਨਾ ਤੇ ਸ਼ੁਰੂ ਹੋਈ ਸੀ ਪਰ ਸਰੀਰ ਦੀ ਸਾਂਹਣਾ ਤੇ ਆ ਕੇ ਟੇਗੀ ਇਹ ਵੇ ਬਨ ਸਾਧ ਦੇ ਸਿੱਧ ਹੋਏ ਕਬੀਰ ਨੇ ਤਾਂ ਹੀ ਦੁਸਤੀ ਕੀਤੀ ਹੈ ਬਨ ਸਾਧਣਾ ਸੀ ਤੁਸੀਂ ਤਸਰੀਰ ਦੀ ਸਾਧਨਾ ਕਰਦੇ ਸਭ ਮਾਰਨ ਦੀ ਫਿਰ ਮੈਨੂੰ ਕੁੱਟਣ ਲੱਗੇ ਤੁਸੀਂ ਤਾਂ ਸਰੀਰ ਦੇ ਨਾਲ ਕਸ਼ਤ ਦੇਣ ਲੱਗੇ ਤੁਸੀਂ ਤਾਂ ਇਹ ਜਦੋਂ ਸਾਧ ਦੇ ਸਾਧ ਦੇ ਸਰੀਰ ਨੂੰ ਰਿਜ਼ਲਟ ਹੋਇਆ ਹੋਵੇ ਸ਼ੋਮ ਪੈਦਾ ਹੋ बडे ਮੁਨੀ ਦੇਵਤੇ देवते कई जो तिन्नी तन ताय तन ताय शरीर किनी दर अंतरा पाए ओना जो किसे ने भी किनारा नहीं मिला और रुड़ाय ਨੀ मिला रास्ता ही नहीं मिला अंतरा पाए और रास्ता ही नहीं मिला अज्ञानता रखते अंतरे नहीं होया ओज्ञानता ही वदी गई अज्ञानता जे पटकते रह गए खोजते ही रह गए सोडना मुनिजन अमृत खोजते ਖੋਇ ਦੇ ਰਹਿ ਮੇਰੀ ਸੋ অমৃত ਗੁਰਤੇ ਪਾਇਆ ਸੋ অমৃত ਗੁਰਤੇ ਪਾਇਆ ਗੁਰ ਕਾਉ ਹੁੰਦਾ ਗੁਰ ਗੱਲ ਵੀ ਹੁੰਦਾ ਪਰ ਜੇ ਗੁਰ ਤੇ ਲਿਖ ਦਿੱਤਾ ਤਾਂ ਇਹ ਪੁਰਖ ਬਾਚ ਕੇ ਲੱਗਦਾ ਗਿਆਨ ਪਾਇਦਾ ਹੁੰਦਾ ਕਿਸੇ ਗੁਰ ਤੋਂ ਪਾਇਦਾ ਹੁੰਦਾ ਵਿਅਕਤੀ ਤੋਂ ਭਾਈ ਦਾ ਹੁੰਦਾ ਗੁਰ ਉਹਨੂੰ ਗਾਣਾ ਨਹੀਂ ਜਿੱਥੇ ਅੰਦਰਲਾ ਪ੍ਰਦਾਨ ਹੋਵੇ ਅੰਤਰਾਤਮਾ ਜਿੱਥੇ ਪ੍ਰਦਾਨ ਹੈ ਨਾ ਇਹ ਅੰਤਰਾਤਮਾ ਦੀ ਬੋਲੀ ਪ੍ਰਦਾਨ ਹੈ ਪੁਰਵਾਸੀ ਗੁਰ ਸਤਗੁਰ ਕਹਿ ਸਕਦੇ ਜਦੋਂ ਅੰਤਰਾਤਮਾ ਪੈਲੀ ਸਟੇਟ ਹੈ ਚੰਗੇ ਕੰਮ ਦੀ ਪ੍ਰੇਰਣਾ ਦਿੰਦਾ ਹੁੰਦਾ ਉਹ ਗੁਰ ਹੈ जिन्नी ओदी नॉलेज है आप सु नॉलेज में नॉलेज पर जब सतपुरुष नु जान लेवे सतपुरुष नु जान लेवे आत्मज्ञान हो जावे सतपुरुष आत्मा नु कह दे जेड़ा मर्दा नहीं एक नु जान लेवे एक सतपुरुष हो जाता है आत्मा और परमात्मा नु अपने जेड़ा निराकारी स्वरूप नु जान लेवे ये मतलब परमेश्वर नहीं है ਪਰਮਾਤਮਾ ਆਪੇ ਬਣ ਜਾਂਦਾ ਉਹ ਤਾਂ ਫਿਰ ਗਾਹਾਂ ਬੁਜਾ ਕੇ ਉਹ ਸੱਤ ਪੁਰਖ ਜਿਨੇ ਜਾਲਿਆ ਸੱਤਗੁਰਦਸਾ ਸੱਤਗੁਰਦਸਾ ਉਹ ਪ੍ਰਮੋਡ ਹੋ ਕੇ ਗੁਰੂ ਹੀ ਸੱਤਗੁਰ ਬਣਦਾ ਤਾਂ ਕਿ ਗੁਰ ਸੱਤਗੁਰ ਕਾਇਕੋ ਜੋ ਸਿੱਖ ਸਿੱਖ ਕਰਦਾ ਉਹ ਤਾਂ ਬਾਸਰ ਕੋ ਪਹਿਲੇ ਹੋ ਰਹਾ ਪਿਆ ਸਤਗੁਰ ਗੁਰ ਕਦੇ ਵਿਦੇਦਾਰੀ ਨਹੀਂ ਦਦਾ ਕੋ ਗਦੇਦਾਰੀ ਆਤਮਾ ਪ੍ਰਾਤਮਾ ਨਹੀਂ ਹੁੰਦਾ ਪ੍ਰਾਤਮਿਕ ਦੇ ਤਾਰੀ ਨਹੀਂ ਭਾਜਾ ਆਤਮਾ ਪ੍ਰਾਤਮਿਕ ਜੀ ਲੀਨ ਹੋ ਜਾਂਦੀ ਹੈ ਫਿਰ ਭੇਜਣਾ ਜਾਣੋ ਮਾਨਸ ਦੇ ਫਿਰ ਇਹਦੇ ਦੇ ਤਾਰੀ ਹੁੰਦਾ ਹੋਇਆ ਵੀ ਦੇ ਤਾਰੀ ਕਿਉਂਕੋ ਉਹਦਾ ਦੇ ਤਾਰੀ ਹੈ ਨਹੀਂ ਇਹਨੇ ਤੇ ਟਿਰਕੁਣੀ ਛੱੜਤੀ ਜਿੰਨਾ ਜੇ ਟਿਰਕੁਣੀ ਜਨਵਾਸ ਆ ਉਹਨਾਂ ਨੂੰ ਦੇ ਤਾਰੀ ਬੰਨਿਆ ਜਾ ਸਕਦਾ ਇਹਨੂੰ ਟਿਰਕੁਣੀ ਛੱਡਣ ਦੇ ਬਾਅਦ ਦੇ ਤਾਰੀ ਟਿਰਕੁਣੀ ਮਾਇਆ ਨਾਲ ਜੋੜਦੀ ਹੈ ਨਾ ਮਾਇਆ ਨਾਲ ਨਹੀਂ ਵਾਇਰ ਨਹੀਂ ਦਿਆ। ਇਹਨੂੰ ਅੱਖਾਂ ਨਾਲ ਦੇਖ ਕੇ ਵੀ ਮਾਇਆ ਤੋਂ ਬਚਣਾ ਆ ਜਾਂਦਾ ਅੱਖਾਂ ਨਾਲ ਦੇਖਦਾ ਵੀ ਹੈ ਪਰ ਮਾਇਆ ਤੋਂ ਬਚਦਾ ਵੀ ਹੈ। ਉਹ ਕੀ ਫਾਰਮੂਲਾ ਹੈ? ਅੱਖਾਂ ਤੋਂ ਦੇਖਦਾ ਵੀ ਹੈ ਮਾਇਆ ਤੋਂ ਬਚ ਕੇ ਵੀ ਰਹਿੰਦਾ ਉਹ ਕੀ ਹੈ? ਇਹ ਨੇਤਰੋ ਮੇਰੇ ਹਰ ਤੋਂ ਮੈ ਜੋਤ। ਹਰ ਵੇਲੇ ਵੇਖੋ। ਪਰ ਮਾਇਆ ਵਾਇਰ ਨਹੀਂ ਦਿਆ। ਦੇਖਦਾ ਹੈ ਪਰ ਮਾਇਆ ਨਹੀਂ ਦਿਆ। ਜਾਣੋ ਜੋਤਨ ਪੁੱਛੋ ਜਾਤੀ ਸਰੀਰ ਵਿੱਚੋਂ ਆਤਮਾ ਨੂੰ ਦੇਖਦਾ ਨਾ ਦੇ ਸਰੀਰ ਨੂੰ ਦੇਖ। ਬਚ ਕੇ ਨ ਆਇਆ ਤੋ ਦੇਖਦਾ ਹੋਇਆ ਵੀ ਮਾਇਆ ਚ ਲਪਟੇ ਨੂੰ। ਸਰਬਨ ਸੁਣਦੇ ਹੋਇਆ ਵੀ ਮਾਇਆ ਚ ਲਪਟੇ ਨੂੰ। ਇਹ ਸਰਬਨੋਂ ਮੇਰੇ ਉਹ ਸੱਚੇ ਸੌਣ ਨੂੰ ਪਿਠਾਏ। ਸੱਚੇ ਸੌਣ ਨੂੰ ਪਿਠਾਏ ਸਰੀਰ ਲੈ। ਸੁਣੋ। जो ਸੱਤ ਬਾਣੀ ਸੁਣੋਂਗਾ ਫਿਰ ਲੁਪਤ ਨਹੀਂ ਹੁੰਦੇ ਜੇ ਦੂਜੀ ਕਥਾ ਕਹਾਣੀ ਸੁਣ ਲਾ ਕੇ ਫਿਰ ਲੁਪਤ ਹੋ ਜੂ ਕਥਾ ਕਹਾਣੀ ਵੀ ਉਹ ਸੁਣੋ ਕਥਾ ਕਹਾਣੀ ਬੇਤੀ ਆਣੀ ਇਹ ਜੀ ਸੁਣੋ ਸਾਸ ਕੀ ਦੁਖੀ ਸਸਰੁ ਕੀ ਪਿਆਰੀ ਇਹ ਵੀ ਤਾਂ ਠਾਈ ਹੈ ਜਿਸ ਤਰੀਕੇ ਨਾਲ कुछ ਹੋਰ ਕਥਨ ਕਰਕੇ ਸੁਝਾਇਆ ਪਿਆ। ਬੁਝਾਰਤ 파 ਕੇ ਇਸ ਫਾਜੋ ਅਰਥਾਇਲ ਜੋ ਗੁਰੂਵਾਰੋਂ ਕਥਾ ਕਹਣੀ ਹੈ। ਹਾਂਜੀ। ਕਲ ਕਲ ਵਾਲੀ ਕਾਮ ਮਦ ਕਲ ਕਲ ਵਾਲੀ ਰਹਾੜੇ ਕਲਪਨਾ ਹੈ ਸਾਡੇ ਅੰਦਰ ਇੱਛਾ ਪੈਦਾ ਹੁੰਦੀ ਹੈ। ਇਹਨੂੰ ਕਾਲਾ ਜਿਹੜਾ ਲੱਭਦਾ ਨਾ ਕੱਕਾ ਲੱਲੇ ਨੂੰ ਸਿਹਰੀ ਇਹ ਸੰਸਕ੍ਰਿਤ ਦਾ ਅਲੱਗ ਦਾ ਪਹਿਲਾ ਵੇਦਾ ਗ੍ਰੰਥਾ ਜਾਇਰਾ ਹੈ ਇਹਦਾ ਅਰਥ ਉਹ ਪਾਪ ਕਰਦੇ ਨੇ ਗਲਦਾਰ ਅਰਥ ਪਾਪ ਨੇ ਗਲਦਾਰ ਅਰਥ ਪਾਪ ਕਰਦੇ ਨੇ ਕਿਉਂਕਿ ਕਲਪਨਾ ਪਾਪ ਰੂਪ ਹੈ ਉਹ ਇਹ ਨਹੀਂ ਜਾਣਦੇ ਕਿ ਕੱਲ ਹੁੰਦਾ ਕੀ ਹੈ ਕੱਲ ਨੂੰ ਪਾਪ ਮੰਨ ਲੈਂਦੇ ਕਲ ਦਾ ਨ ਉਹ ਚ ਕਲਪਨਾ ਆਇਆ ਕਲਪਨਾ ਦਾ ਨਾਲ ਕਾਲ ਵੀ ਆਇਆ ਕਾਲ ਕਲਪਨਾ ਕਦੇ ਨਾ ਖਾਇ ਵੈਜਨੇਸ਼ਨ ਹੋਣਾ ਹੈ ਵੈਜਨੇਸ਼ਨ ਹੋਣਾ ਵੈਜਨੇਸ਼ਨ ਹੋਰ ਗੱਲ ਹੈ ਤੋ ਵੈਜਨੇਸ਼ਨ ਹੁੰਦਾ ਕਿਸੇ ਚੀਜ਼ ਦਾ ਜਿੱਦਾ ਪਤਾ ਨਾ ਹੋਵੇ ਸੁਣ ਲਈ ਪਤਾ ਨਹੀਂ ਹੈ ਇੱਛਾ ਜਿਹੜੀ ਪੈਦਾ ਕਰਨੀ ਜਮਾਇ ਉਹਨੂੰ ਕਲਪਨਾ ਕਰਦਾ ਅਸੀਂ ਜਿਹੜਾ ਤਾਣਾ ਬਾਣਾ ਬੁਣਦੇ ਆ ਇੱਥੋਂ ਦਾ ਕਰ ਲਾਂਗੇ ਇੱਥੋਂ ਦਾ ਕਰਨਾ ਚਾਹੀਦਾ ਇੱਥੋਂ ਉਹ ਕਰਨਾ ਚਾਹੀਦਾ ਕਲਪਨਾ ਹੁੰਦੀ ਹੈ ਇਸ ਗੱਲ ਦੀ ਕਿ ਉਹ ਕਿਹਾ ਜਾ ਸਰੂਪ ਉਹ ਤਾਂ ਕਲਪਨਾ ਦਾ ਉਹਨੂੰ ਹੈ ਗੁਰਬਾਣੀ ਚ ਕਲਪਨਾ ਕਲਪਨਾ ਅੰਦਾਜ਼ਾ ਦੂਜਾ ਨੌਂ ਦਾ ਸੋਚ ਹੈ ਹਾਂ ਸੋਚ ਵੀ ਸੋਚ ਵੀ ਕਲਪਨਾ ਦਾ ਨੋ ਸੋਚ ਸੋਚ ਜਾਂਦਾ ਕੋਈ ਨਾ ਕਰ ਵਾਲੀ ਕਾਮ ਮਦ ਕਾਮ ਮਦ ਕਿਉਂ ਹੈ ਕਰ ਵਾਲੀ ਇਹਦੇ ਵਿੱਚ ਇਹਦੇ ਵਿੱਚ ਕਾਮਨਾ ਹੈ ਇਛਾ ਤੇ ਕਾਮ ਦੀ ਛਾਵਾਂ ਛਾਵਾਂ ਕਿੰਨੀ ਨੇ ਲੋੜ ਹੈ ਸਾਡੀ ਮਾਇਆ ਦੀ ਭੁੱਖ ਕੋਈ ਭੁੱਖ ਹੋ ਸਕਦੀ ਹੈ ਭੁੱਖ ਤਾਂ ਇੱਕ ਤਰ੍ਹਾਂ ਦੀ ਹੈ ਪਦਾਰਥ ਦੀ ਭੁੱਖ ਵੀ ਹੋ ਸਕਦੀ ਹੈ ਬੱਡੇ ਉਦਾਂ ਦੀ ਭੁੱਖ ਵੀ ਹੋ ਸਕਦੀ ਹੈ ਤੇ ਆਪੀ ਉਦੀ ਵੀ ਹੋ ਸਕਦੀ ਹੈ ਕੋਈ ਹੰਕਾਰ ਦੀ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਜਿਹੜੀ ਸਾਡੀ ਆਪਣੀ ਮਰਜ਼ੀ ਦੀ ਭੁੱਖ ਹੈ ਉਹ ਪਰਮੇਸ਼ਰ ਦੀ ਜਿਹੜਾ ਸਾਡਾ ਭੜਾ ਰੂਟ ਆਸ-ਪਾਸ ਕਰਕੇ ਕੁਝ ਲੜ ਜਾਂਦੀ ਉਹ ਕੁਝ ਦੇ ਰਿਹਾ ਸਾਨੂੰ ਅਸੀਂ ਕਿਸੇ ਵੀ ਤਰੀਕੇ ਸਾਡੇ ਨਗਾ ਖਜ਼ਾਨਾ ਚ ਹੈ ਉਹ ਮੈਨੂੰ ਮਿਲ ਜੇ। ਇਹ ਮੈਂ ਉਹ ਹਾਸਲ ਕਰਨਾ। ਜਿਹੜੇ ਨਾਲ ਤੇ ਵਿਰੋਸਾ ਨਹੀਂ। ਵਿਰੋਸਾ ਹੋ ਗਿਆ। ਆਪਣੇ ਮਰਜ਼ੀ ਨਾਲ, ਆਪਣੀ ਤਾਕਤ ਨਾਲ, ਆਪਣੀ ਚਲਾਕੀ ਨਾਲ, ਆਪਣੀ ਅਕਲ ਨਾਲ ਹਾਸਲ ਕਰਨ ਦੀ ਜਿਹੜੀ ਹੈ। ਸਹਿਜ ਗਿਆਨ ਪੰਲਾ ਹੋਏ ਕਰਨੇ ਚੱਲੇ ਨਾ ਕਿੰਨਾ ਤੂੰ ਸਣਾ ਹੋਵੇ। ਜਾਰ ਬਰਨ ਲਿਆ ਜਸ ਉਹ ਤਾਂ ਕੁਛ ਨਹੀਂ ਪਪੜੀ ਵਰਜੀ ਨਾ ਜੋ ਵਰਜੀ ਦੇ ਹਾ ਉਹਨੂੰ ਰਾਜੀ ਕਰ ਲਵੇ ਉਹਨੂੰ ਰਾਜੀ ਕਰਕੇ ਜੋ ਲਾ ਲਵੇ ਗੱਲ ਹੈ ਕਨ ਕਨ ਵਾਲੀ ਕਾਮਵਾ ਠਾਕੁਰ ਆਪਰੇ ਤੇ ਇਹ ਗੱਲ ਹੋਰ ਹੈ ਵਾਂਗੇ ਠਾਕੁਰ ਆਪਰੇ ਤੇ ਠਾਕੁਰ ਨੂੰ ਢਾਕਰ ਮੰਨ ਕੇ ਮੰਗੇ ਉਹ ਗੱਲ ਹੋਰ ਹੈ ਆਪਣੀ ਚਤਰਾਹੀ ਰਾਹ ਹਾਸਲ ਕਰਨਾ ਚਾਹੁੰਦਾ। ਇਹ ਠਾਕਰ ਨਹੀਂ ਦਿੰਦਾ ਤਾਂ ਐ ਲੈ ਲੂਗਾ। ਕਿਸੇ ਜੁਗਤ ਨਾਲ ਜੋਰ ਨਾ ਜੁੰਤੀ ਛੋਟੇ ਸੰਸਾਰ। ਸੰਸਾਰ ਜਬਰੀ ਛੋਟ ਸਕਦਾ ਤੂੰ ਕਿੰਨਾ ਹੀ ਤੇਰੇ ਜੋਰ ਹੋਵੇ। ਕਦਾਂ ਤੂੰ ਸਮਝਦਾ ਨਾ। ਇਹ ਜਿੰਗ ਮੁੰਗਣਾ ਲਈ ਫਿਰ ਤਾਂ ਇਹ ਸਾਰਾ ਕੁਛ ਮਾਲਕ ਮੰਗਿਰ ਰਹੇ ਲੋਗ ਹਾ ਗੁਰਮਨ ਕਹਿ ਰਹੀ ਮੰਗ ਰਹਾ ਮੰਗ ਰਹਾ ਫਿਰ ਵੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਦੇਵੇ ਤਾਂ ਉਹ ਦੇਵੇ ਨਾ ਜਿੱਦਣ ਇਹਨੂੰ ਠਾਕੁਰ ਦਾ ਪਤਾ ਲੱਗ ਇਹਦੀ ਮੰਗ ਵੀ ਉਹਦਾ ਕਰਨੀ ਮੰਗਿਆ ਸਭ ਤੋਂ ਜਾਣੋ ਨਾਲੇ ਹਾਲੇ ਠਾਕੁਰ ਦਾ ਨਹੀਂ ਪਤਾ ਘਰ ਵਿੱਚ ਠਾਕੁਰ ਦਾ ਨਾ ਠਾਕੁਰ ਬਰਬੜੇ ਫਗੋਰ ਆਪਣੇ ਤੇ ਜਿਹੜਾ ਇਹਦਾ ਆਪਣਾ ਠਾਕਰ ਆ ਸਾਰਿਆਂ ਦਾ ਠਾਕਰ ਨਹੀਂ ਹੈ ਉਹ ਉਹਦੋਂ ਹੋ ਕੇ ਉਹ ਇਹਦਾ ਠਾਕਰ ਸਾਂਝਾ ਬਣਾਈ ਬੈਠਾ ਸਾਰਿਆਂ ਦਾ ਆਪਣੇ ਕਹਿੰਦੇ ਗਿਆ ਠਾਕਰ ਦੇ ਕਹਿੰਦੇ ਰਾਜਾ ਰਾਜਾ ਹੀ ਹੁੰਦਾ ਸਾਰਿਆਂ ਦਾ ਹੁੰਦਾ ਰਾਜਾ ਆਪਣਾ ਵੀ ਹੁੰਦਾ ਰਾਜੇ ਨਾਲ ਆਪਣਾ ਵੀ ਲਫਜ਼ ਲੱਗਦਾ ਲੱਗਦਾ ਰਾਜਾ ਸਾਰਿਆਂ ਦੇ ਹੁੰਦਾ ਰਾਜਾ ਰਾਜਾ ਦਾ ਰਾਜਾ ਲੱਗਦਾ ਤੈਨੂੰ ਆਪਣਾ ਲੱਗਦ ਕਿਉਂ ਲੱਗਿਆ ਆ ਰਾਜਾ ਮੈਂ ਆਪਣੇ ਬੁਰ ਪੁੱਛ ਦੇਖਿਆ ਆਪਣਾ ਲੱਗਦ ਕਿਉਂ ਲੱਗਿਆ ਤੇਰਾ ਬਖਰਾ ਉਹਦਾ ਬਖਰਾ ਉਹ ਜਿਹੜਾ ਬੋਲਦਾ ਹਾਂ ਸਭ ਤੋਂ ਬਖਰਾ ਬਖਰਾ ਠਾ ਲਾ ਹਾਂ ਰਾਜਾ ਹਮ ਤੇ ਆ ਗੱਲ ਉਹ ਇਥੇ ਆਪਣਾ ਪਰਾਇਆ ਹੈ ਕਾਮ ਮਦ ਮਨਵਾ ਪੀਵਨ ਹਾਕ ਕਲ ਕਲਵਾਲੀ ਇਸ ਕਰਕੇ ਆਏ ਤੇ ਅੰਦਰ ਨਸ਼ਾ ਹੈ ਮਦ ਨਸ਼ਾ ਹੰਕਾਰ ਤੇ ਹੰਕਾਰ ਵੱਧਦਾ ਉਹ ਬੱਦੀ ਮੈਂ ਕਰ ਲੂਗਾ ਮੈਂ ਕਰ ਲੂਗਾ ਮੈਂ ਮੈਂ ਕਰ ਦਿੱਤਾ ਮਨਵਾ ਪੀਵੜਾ ਮਨਵਾ ਹੀ ਮਦ ਹੈ ਜਿਹੜੀ ਇੱਛਾ ਸ਼ਕਤੀ ਹੈ ਉਹ ਵਦ ਹੈ ਇੱਛਾ ਇੱਕ ਸ਼ਕਤੀ ਹੈ ਸਾਡੇ ਅੰਦਰ ਕਹਿੰਦੇ ਇੱਛਾ ਸ਼ਕਤੀ ਹੋਉਦਾ ਨਾ ਇੱਛਾ ਸ਼ਕਤੀ ਸਾਡੀ ਪਰਮੇਸ਼ਰ ਨਾਲ ਟਕਰਾਉਂਦੀ ਹੈ ਇਹ ਵੀ ਸ਼ਕਤੀ ਉਹਦੀ ਵੀ ਸ਼ਕਤੀ ਹੈ ਇਹਦੇ ਵਿਰੋਧ ਚ ਖੜੀ ਹੈ ਇੱਛਾ ਸ਼ਕਤੀ ਸਾਡੀ ਜਿੰਨਾ ਕੇ ਸਾਡੇ ਜਿੱਛਾ ਸ਼ਕਤੀ ਹੈ ਉਹਨਾਂ ਕੇ ਅਸੀਂ ਸਾਖਤਾਂ ਜਾਦੇ ਚਾਰ ਛਤੀ ਨੇ ਹਥਿਆਰ ਸੜ ਦਿੱਤੇ ਸਰੈਂਡਰ ਹੋ ਗਈ ਮੇਰੇ ਗੁਰੂ ਦੇ ਉਹ ਹੀ ਰਾਜਾ ਜਨ ਜਿਹੜਾ ਲੜਦਾ ਹੈ ਉਹ ਲੈ ਚ ਦੁਸ਼ਮਣ ਜਿਆ ਹਥਿਆਰ ਸੜ ਕੇ ਸਲੈਟਰ ਕਰ ਗਿਆ ਫਿਰ ਵੀ ਛੋੜਦਾ ਨਹੀਂ ਰਿਹਾ ਇਹ ਰਾਜਿਤ ਗੁਰੂ ਦੀ ਹਥਿਆਰ ਸੜਦੇ ਸਲੈਟਰ ਹੋ ਗਿਆ ਫਿਰ ਉਹ ਇਹ ਤਾਂ ਕਰਦੀ ਇਹ ਕਾਮਨਾ ਮਦਦ ਕਰਦੇ ਫਿਰ ਉਹ ਰਹਿਮ ਤੇ ਉਹਦੇ ਵੇ ਇਦਾਂ ਨਹੀਂ ਗੱਲ ਕਰਦੀਏ ਬਸ ਛੜ ਚਾਦੇ ਮੈਂ ਤਾਂ ਉਹਦੇ ਰਹਿਮ ਤੇ ਮਾਰ ਬਾਵੇਂ ਰਾਗ ਰਾਗ ਬਾਵੇਂ ਮਾਰ ਮੈਂ ਤਾਂ ਉਹਦੀ ਛੜ ਗਿਆ ਛੜਣਾ ਇਸ ਪਾਸੇ ਕਾਮਨਾ ਨੂੰ ਮਦਦ ਕਰਦੇ ਲੱਗਦਾ ਨਸ਼ਾ ਹੁੰਦਾ ਕਾਮ ਹੰਕਾਰ ਵੀ ਹੁੰਦਾ ਇਹ ਜ ਹੋਵੇ ਦੂਰੇ ਉਪਚੋ ਜੇ ਕਾਮਨਾ ਪੈਦਾ ਹੁੰਦੀ ਹੈ ਹੰਕਾਰ ਹੈ ਉਹਦੇ ਜੜ੍ਹ 'ਚ ਇੱਕ ਜਿਵੇਂ ਲੱਕੜ 'ਚ ਅੱਗ ਪ੍ਰਗਟ ਚਾਲੂ ਨਹੀਂ ਹੈ ਦੀ ਇਹ ਦੋ ਚੀਜ਼ਾਂ ਦੇ ਕਾਗ ਹੈ ਕਮਟੀ ਹੈ ਲੱਕੜ ਨੂੰ ਜੇ ਕਹਿ ਦੀ ਤਾਂ ਕੋਈ ਨਹੀਂ ਬੰਦਾ ਬਾਤ ਬਿਆਣੇ ਨਹੀਂ ਬੰਦੇ ਗੱਲ ਨੂੰ ਬਿਆਣੇ ਨਹੀਂ ਬੰਦੇ ਚਾਲੂ ਬੱਚੇ ਬੰਨਣਗੇ ਜੇ ਕਾ ਮਿੱਟੀ ਐ ਲੱਕੜ ਮਿੱਟੀ ਐ ਰਾਂਗ ਬਣਾ ਉਹ ਵੇਦਾ ਡੰਡਾ ਬੰਨ ਲਓ ਉਹ ਸਭ ਚੈਰੀ ਆ ਸਕਦਾ ਕੀ ਬਗਦਾ ਐਕਚੁਅਲੀ ਦੋਈ ਚ ਜਾ ਵਲਣ ਲੈ ਕੇ ਆਉਂਦਾ ਕਹਿੰਦਾ ਕੀ ਲੈ ਗਿਆ ਕਹਿੰਦਾ ਮਿੱਟੀਆ ਰੰਗ ਉਹ ਕਹਿੰਦਾ ਕਮੜਾ ਹੋ ਗਿਆ ਉਹ ਸੱਚ ਬੋਲਦਾ ਕਮੜਾ ਕੋ ਰੂਪ ਦੀ ਜੇ ਤਾਂ ਰੂਪ ਦੀ ਜੇ ਤਾਂ ਨੋ ਵੀ ਦੂਜਾ ਸਾਡੇ ਕੋਲ ਇਹ ਜਿਹੜਾ ਰੂਪ ਹੈ ਨਾ ਵੱਧ ਉਹ ਰੂਪ ਦੱਸਿਆ ਜਿਹੜਾ ਰੂਪ ਅਸਲੀ ਹੈਗਾ ਉਹਦਾ ਜਿਹੜਾ ਨੁਕਸਾਨ ਕਰਨ ਵਾਲਾ ਰੂਪ ਹੈ ਜਿਹੜਾ ਸਾਨੂੰ ਹੁਕਮ ਦੇ ਵਿਰੋਧ ਚ ਖੜਾ ਕਰਦਾ ਕਾਮਨਾ ਦਾ ਰੂਪ ਜਿਹੜਾ ਨੰਦਿਆ ਹੋਇਆ ਹੈ ਨਾ ਜਿਹੜਾ ਨੰਦਿਆ ਹੋਇਆ ਰੂਪ ਹੈ ਕਾਮਨਾ ਦੋ ਕਿਸਮ ਦੀ ਹੁੰਦੀ ਹੈ ਅਸਲ ਚ ਬਦਰ ਨਹੀਂ ਦੋ ਕਿਸਮ ਦੀ ਹੁੰਦੀ ਕਾਮਨਾ ਦਾ ਦੋ ਕਿਸਮ ਦੀ ਹੈ ਸ਼ਾਵਣ ਸਰਸੀ ਕਾਵੜੀ ਵੀ ਕਾਮਨਾ ਰੰਗ ਦੇ ਵੀ ਕਾਹਨੋਂ ਹੋ ਸਕਦੀ ਹੈ। ਭੁੱਖਤਾ ਭੁੱਖਤਾ ਨਾ ਆਉਂਦੀ ਹੋ ਸਕਦੀ ਹੈ। ਸੱਚ ਇਹ ਨਾਲ ਕਿ ਕਿ ਭੁੱਖ ਦੇ ਦੋ ਕਿਸਮ ਦੀ ਹੋਗੀ। ਕਾਹਬਨਾ ਦੋ ਪ੍ਰਕਾਰ ਦੀ ਹੁੰਦੀ ਹੈ ਬਾਦ ਇੱਕੋ ਪ੍ਰਕਾਰ ਦੀ ਹੁੰਦੀ ਦੋ ਪ੍ਰਕਾਰ ਦੀ ਉਹ ਉਹ ਜਿਹੜੀ ਮਦਕਤਾ ਹੈ ਉਹ ਇੱਕੋ ਹੀ ਗੱਲ ਹੈ। ਉਹ ਇਸੇ ਦੀ ਤਾਂ ਉਹ ਥੋੜੀ ਜੀ ਇਹ ਨਹੀਂ ਕੀਤਾ। ਸੋੜ ਵਿੱਚੋਂ ਹੀ ਲੱਕੜ ਅੱਕ ਲੈਂਦੀ ਹੈ ਸਾਰੀ। ਲੈ ਲੀਏ ਬਸ ਸੂਰਜੀ ਦੀ ਤੁੱਪ ਜਿਵੇਂ ਸਾਰੀ ਲੱਕੜ ਨੂੰ ਸਾਰੇ ਬ੍ਰਹਸਪਤੀ ਨੂੰ ਅੱਗ कर दी ਇਕੱਠੀ ਕਰਦੀ ਹੈ ਐਂ ਕੁਛੇ ਹੈ ਉਸ ਅੱਗ ਨੂੰ ਪ੍ਰਚੰਡ ਕਰਦੀ ਜਿਹੜੀ ਬਾਹਰ ਨਹੀਂ ਸਰਾਵਣ ਜਿਹਨੂੰ ਆਪਾਂ ਕਹਿੰਦੇ ਇੱਕ ਕਈ ਹਾਲਤਾਂ ਵਿੱਚ ਕਈ ਹਾਲਤਾਂ ਵਿੱਚ ਇਹਨੂੰ ਪ੍ਰਚੰਡ ਕਰਨ ਦੇ ਵਿੱਚ ਸਹਾਇਕ ਹੈ ਉਹ ਜਿਹੜਾ ਹੰਕਾਰ ਹੈ ਨਾ ਦਲਾ ਉਪਦੇ ਹੋਰ ਦੀ ਸਹਾਇਕ ਜਿਵੇਂ ਜੜਾਂ 'ਚ ਪਾਣੀ ਪਾਉਂਦੇ ਆ ਲੱਕੜ 'ਚ ਅੱਗ ਵੱਧਦੀ ਹੈ ਬੜੋਲ ਰੱਖੇ ਤਾਂ ਅੰਕਠੀ ਹੁੰਦੀ ਆ ਰਿੱਟੀ ਕੱਟੀਏ ਪਾ ਰਹੇ ਪਾਣੀ ਬਹੁਤ ਕੁਝ ਇਹਦੇ ਵਿੱਚ ਵੀ ਹੈ ਸ੍ਰਿਸ਼ਟੀ 'ਚ ਜਿਹੜਾ ਉਲਟ-ਪੁਲਟ ਸਾਨੂੰ ਲੱਗਦਾ ਵਾਣੀ ਦਾ ਕਿ ਤੁਖਲਾਬ ਹੈ ਬਾੜਿਆਰਾں ਇਕੱਠੇ ਰਖਿਓ ਨੇ ਬਾੜੀ ਵੀ ਅਗਰ ਉਪੇਉ ਸਾਰੀ ਉਹ ਜਿਹੜੀ ਹੈ ਨਾ ਐਸੀ ਗੁੰਜੜਦਾਰ ਗੱਲ ਹੈ ਪਰ ਪੰਚਾਇ ਵਸੇ ਬੇਸਮਝ ਸਮਝ ਤੋਂ ਪਰੇ ਚਲੇ ਜਾਂਦੀ ਹੈ ਗੱਲ ਜੇ ਦੇਖਦੇ ਆ ਇਹਨੂੰ ਵੀ ਠੀਕ ਹੈ ਇੱਥੇ ਵੀ ਲੱਗੂ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਕਿਹੜਾ ਅੰਕਾਰ ਹੈ ਜਿਹੜੀ ਸ਼ਰਾਬ ਹੈ ਉਹ ਬਦੌਰ ਚ ਸਾਇਆ ਹੈ ਕਿ ਕਿਸੇ ਹੱਦ ਸੁੱਕੀਆਂ ਲੱਗਣਾ ਜਿਹੜੀਆਂ ਨੇ ਸੁੱਕੇ ਦਰਸਨ ਚੜ ਜਾਂਦੇ ਜੰਗਲ ਨੂੰ ਅਗਰ ਕੋ ਕਿੱਲੇ ਚਲੋ ਪੱਤੇ ਪੁੱਤੇ ਨੂੰ ਸੇਕ ਦਰਜੂ ਨਹੀਂ ਚੜਦੇ ਸਾਰਿਆਂ ਤੇ ਸ਼ੜਾਪੁਰਾ ਅਸਰ ਨਹੀਂ ਕਰਦੀ ਬਹੁਤ ਸੰਤਰੀ ਦੇਖ ਕੇ ਸੰਤ ਪਿਆਰੇ ਨੂੰ ਦੇਖਿਆ ਕਿਹਨੇ ਜਿਹਨੇ ਦੇਖਿਆ ਹੋਵੇ ਦੇਖਿਆ ਸਾਰਾ ਸ਼ਰਾਬੀ ਦਸ ਜਿਹੜੇ ਸ਼ਰਾਬੀ ਤੇ ਉਹ ਵੀ ਆਏ ਬੈਠੇ ਰਹਿੰਦੇ ਸਾਰਾ ਉਹਦੇ ਕੋਲ ਸਾਰਾ ਜਸ ਸਿੰਘ ਖੋਟੇ ਗਮੀਣਾ ਕਰਦੇ ਤੇ ਸਾਰੇ ਕਹਿੰਦੇ ਮੀੜੇ ਕਰਦੇ ਮੈਂ ਕਹਿੰਦਾ ਹਾਂ ਕਹਿੰਦਾ ਪੇੜੂ ਰੇ ਪੇੜੂ ਤਾਂ ਨਾ ਉਹ ਕਹਿੰਦਾ ਪੇੜੂ ਇਹ ਸਾਰੇ ਮੀਲੇ ਕਰਦੇ ਇਕੱਠੇ ਹੋ ਕੇ ਬੈਠ ਨਹੀਂ ਸਕਦੇ ਅਸੀਂ ਦੋ ਜਣੇ ਚਾਰ ਜਣੇ ਲੜ ਸੀ ਉਹਦੇ ਕੋ 20 20 ਬੈਠੇ ਦੋ ਜਣੇ ਲੜ ਪੈਣ ਮਜਾ ਲਾ ਕੀ ਇਹ ਉਹਨੇ ਸਾਬਤ ਕਰਤਾ ਵੀ ਇਹ ਕੋਈ ਖਰਾਬ ਚੀਜ਼ ਨਹੀਂ ਹੈ ਖਰਾਬ ਜਿਆਦਾ ਜਿਆਦਾ ਸੀ ਮਨ ਨੂੰ ਛੂਡ ਦਿੰਦੇ ਆ ਜੇ ਮਨ ਨੂੰ ਪ੍ਰੈਸ ਕਰਕੇ ਰੱਖੀਏ ਜਿਵੇਂ ਜੇ ਪਾਣੀ ਉਹਦੇ ਵਿੱਚ ਹੋਵੇ ਜਿੱਨਾ ਜਰ ਤਰਫ ਚ ਪਾਣੀ ਐ ਰੱਖ ਦੀ ਲੱਕੜ ਸੇਫ ਐ ਅਗਲੀ ਪੜ ਸਕਦੀ ਸਾਡੀ ਯਾਦ ਕਿੱਥੇ ਐ ਸਾਡੇ ਖੋਪੜੀ ਚ ਕੀ ਐ ਤਾਂ ਇਹ ਸਿਰਾ ਉਥੇ ਕੰਮ ਕਰਦੀ ਜਾ ਕੇ ਪਟ્રોલ ਨੂੰ ਆ ਕੇ ਬੰਦਿਆ ਪਾਣੀ ਨੂੰ ਨਹੀਂ ਕਰਦੀ ਹਮ ਬੜਾ ਮਟੇ ਦੈ ਲੋ ਬੰਦਿਆ ਪਾਣੀ ਨੂੰ ਨਹੀਂ ਕਰਦੀ ਪਰ ਇਹ ਤਾਂ ਵੀ ਅਲੱਗ ਹੈ ਬਹੁਤ ਹੋਤਰ ਇਹ ਦਾ ਜਿਹੜਾ ਜ਼ਿਆਦਾ ਪ੍ਰਚਾਰ ਕੀਤਾ ਹੈ ਗਲਤ ਅਸਲ ਤੇ ਦੁਰਮਤ ਨੂੰ ਛੱਡਣਾ ਸੀ ਹੋਵੇਂ ਨੂੰ ਛੱਡਣੀ ਸੀ ਹੁੰਦੀ ਹੈ ਨਾ ਤੇ ਪ੍ਰਚਾਰ ਦਾ ਉਹ ਬਦਲਤਾ ਸਾਡੇ ਵੀ ਇਹੀ ਕਰਦੇ ਰਹੋ ਸਿੱਖਾ ਦੇ ਵਿੱਚ ਕੀ ਹੈ ਅਸਲੀ ਜੀ ਛੱਡਣੀ ਹੁੰਦੀ ਸਿੱਕੀ ਤਾੜਨ ਹੁੰਦੀ ਨਹੀਂ ਐ ਨੂੰ ਹੋਵੇ ਨਸ਼ਾ ਵੱਲੂ ਫੱਕ ਕੇ ਅਨੁਸ਼ੀਸ਼ਾ ਦੇ ਜੱਟ ਅਮਲੀ ਕੋ ਜੈਸੇ ਅਮਲ ਬਾਹਤ ਐਸੇ ਮੇਰੇ ਮਨ ਰਮਈਏ ਅਮਲੀ ਅਮਲ ਵਾਸਤੇ ਸੰਸਾਰ ਛੱਡ ਦਿੰਦਾ ਤੂੰ ਛੱਡ ਕੇ ਦਿਖਾ ਸੰਸਾਰ ਬੰਦ ਉਹ ਕਿਤੇ ਕੀ ਵਾਸਤੇ ਸੰਸਾਰ ਜਿਹਨਾਂ ਨੇ ਛੱਡਣਾ ਨਹੀਂ ਉਹਨਾਂ ਨੇ ਹਰਾਮ ਕੀਤਾ ਹੈ ਪ੍ਰਚਾਰ ਕਰ ਬਹੁਤ بڑا ਹਰਾਮ ਇਹਦੇ ਪਿੱਛੇ ਜਿਹੜੇ ਨਸ਼ਾ ਦਾ ਪ੍ਰਚਾਰ ਕਰਦੇ ਨੇ ਕੋਈ ਸਿੱਖੀ ਨਹੀਂ ਅਪਣਾਉਣੀ ਉਹਨਾਂ ਨੇ ਉਧਰ ਗੱਲ ਕਰਨੇ ਨਹੀਂ ਦੇਣੀ ਔੜੇ ਨਹੀਂ ਰਹੀ ਉਧਰ ਗੱਲ ਉਡੀ ਗੱਲ ਸ਼ੁਰੂ ਹੀ ਨਾ ਹੋਵੇ ਹੋਰੇ ਰੌਲਾ ਪਾ ਰਹੀ ਜਿਹੜਾ ਵੱਡਾ ਨਾ ਚੱਲ ਕੇ ਉਹਨੂੰ ਕਹਿੰਦੇ ਉਹ ਕਦੇ ਕਰਨ ਨੂੰ ਛੱਡਣਾ ਨਹੀਂ ਉਹਨਾਂ ਨੂੰ ਕਾਮਨਾ ਮਦ ਇੱਛਾ ਮਦ ਹੈ ਸਾਡੀ ਛੱਡੋ ਔਰ ਮਨੂਆ ਵੀ ਸਰੀਰ ਪਿੰਦਾ ਦੂਜੀ ਤਾਂ ਇਹ ਮਨੂਆ ਵੀ ਬਣਾ ਰਹਾ ਸੁਮਬੱਦ ਜੋਤ ਨਾਲ ਹੈ ਸਾਡਾ ਯਤ ਨਾਲ ਨਹੀਂ ਜਾਣੋ ਜੋਤ ਨਾ ਪੁੱਛੋ ਜਾਂਦੀ ਤੇ ਉਹਨਾਂ ਨੇ ਯਤ ਨਾਲ ਜੋੜਤੀ ਲਿਆ ਕੇ ਕੱਢ ਗੁਰਬਤ ਕਿੱਥੇ ਆਉ ਕੌਣ ਦਾ ਨੇ ਗੁਰਬਤ ਕੋਈ ਗੁਰਬਤ ਦੀ ਗੱਲ ਨਹੀਂ ਹੈ ਸਮਝ ਗਏ ਹੋ ਬਈ ਉਹ ਰਜਾਦਾਰ ਵਾਲਾ ਭਾਦੀਏ ਇਹਨੂੰ ਅਗਰਬਤ ਬਣਾ ਦਈਏ ਤਾਂ ਕਿ ਕੈਮਰਾ ਹੁਣ ਦੇ ਇਹ ਗੱਲ ਉਹਨਾਂ ਨਾਲ ਤੁਸੀਂ ਉੱਥੇ ਕਰਦੇ ਹੋ ਕਾਮਨਾ ਦੀ ਪੂਰੀ ਕਰਦੇ ਕਾਮਨਾ ਦੀਆਂ ਬੁਰੀਆਂ ਕਰਕੇ ਅਰਦਾਸਾ ਕਰਦੇ ਹੋ ਤੁਸੀਂ ਕਾਮਨਾ ਵਧਾ ਰਹੇ ਨੇ ਬਲਕੇ ਵਧਾ ਰਹੇ ਹੋ ਤੁਸੀਂ ਇਹ ਨਹੀਂ ਕਿੱਟਨੀ ਬਣਾਏ ਨੇ ਲੋਭ ਬੜ ਕੇ ਆਉਦਾ ਆਇਆ ਕੀਨੇ ਧਰਮ ਨੂੰ ਬਹਾਇ ਲੋ ਤਾਰ ਮੁਕਬਲ ਤੇ ਖੁਦਲੋਭ ਹੀ ਨੇ ਆਗੂ ਖੁਦਲੋਭ ਹੀ ਨੇ ਤਪਾ ਲੋਭ ਹੀ ਨਹੀਂ ਹੁੰਦਾ ਜਿਹੜਾ ਲੋਭ ਹੀ ਤਪਾ ਨਹੀਂ ਹੁੰਦਾ ਲੋਭ ਦੀਓ ਗੱਲ ਕੀਤੀ ਹੈ ਖਰਾਬ ਉੱਤੇ ਤਪਾ ਨਹੀਂ ਇਹ ਲੋਭ ਹੈ ਲੋਭ ਨੂੰ ਤੁਸੀਂ ਪ੍ਰਚਾਰ ਕਰਦੇ ਹੋ ਗੁਰਦੁਆਰੇ ਬਾਣੀ ਦਾ ਨੌਂ ਤੇ ਖਰਾਬ ਖੜੀ ਹੈ कल कल वाली काम मद मनवा पीवन हार क्रोध कटोरी मोह पिलावा अहंकार क्रोध कटोरी क्रोध तर हो गई उठे जिथे कामना रहोगी उठे क्रोध नाल रहूंगा काम दे नाल क्रोध हमेशा ही जदा इच्छा नी बुरी हुंदी ता क्रोध नाल खडा इच्छा के ना केतोन कत विरोध होदो इच्छा दी पूर्ति दा कदो भी विरोध हो सकदा ਇਹ ਕਹਿੰਦੇ ਹੁੰਦੇ ਚੌਂਸਾ ਮੈਂ ਵਜ਼ੀਰ ਬਣਨਾ ਦੁਆ ਉਹਨੂੰ ਬਣ ਨਹੀਂ ਦਿੰਦਾ ਤੇ ਉਹ ਵਿਰੋਧ ਖੜਾ ਹੋ ਜਾਂਦਾ ਉਹਦੇ ਗੁੱਸਾ ਉੜਾਈਏ ਕੋਈ ਉਹਨੂੰ ਬੋਟ ਨਹੀਂ ਪਾਉਂਦਾ ਇਹ ਆ ਕੋਈ ਬੋਟਾਉਂਦੀ ਹੈ ਤੋੜਦਾ ਹੈ ਇਹ ਆ ਉਹਦੇ ਮੁਕਾਬਲੇ 'ਚ ਖੜਾ ਹੁੰਦਾ ਤੇ ਗੁੱਸਾ ਤਾਂ ਉੜਾਈਏ ਜਿਹੜਾ ਉਹਦੀ ਇੱਛਾ ਪੂਰਤੀ 'ਚ ਢੱਕਾ ਬਣਦਾ ਉਹਨੂੰ ਉਹ ਕੰਡਾ ਲੱਗਦਾ ਮੇਰੇ ਪੈਰ 'ਚ ਕੰਡਾ ਜਿਵੇਂ ਕੰਡਾ ਕੱਢਦੀ ਤੈਨੂੰ ਬਾਹਰ ਪੈਰ 'ਚੋਂ ਆ ਕਹਿੰਦੇ ਵੀ ਉਹ ਕਰਦੇ ਕੰਡਾ ਜਦਾਂ ਕੁਬਤਾ ਨਾਲੋਂ ਮੈਨੂੰ ਇਹ ਕੜਤਾ ਕੰਡਾ ਜੀ ਆ ਵੀ ਕੰਡਾ ਜੀ ਅਸੀਂ ਕੜ ਦਤਾ ਇਹ ਉਹਦਾ ਕੰਡਾ ਸੀ ਬਾਹਰ ਕਰਤਾ ਚਲ ਉਹ ਤਕਲੀਫ हट ਗਈ ਤੇ ਦੁਰਮਤ ਮੰਦ ਜਿਹੜੀ ਬੁੱਧੀ ਨੇ ਬਿੱਤੀ ਹੋਈ ਹੈ ਇਹ ਕਿਨੇ ਜਿਹੜੀ ਦੁਰਬਦ ਦੁਰਬੁੱਧ ਹੈ ਨਾ ਗਬੁੱਧ ਹੈ ਇਹੀ ਦੁਰਮਤ ਹੈ ਅਸਲ ਚਾਹ। ਇਹ ਦੁਰਮਤ 부ਧ ਨੂੰ ਕਬਦ ਕਰ ਦਿੰਦੀ ਹੈ ਕਹ ਲਓ। ਦੁਰਮਤ ਜੰਗ ਦੇ ਕੋਲ ਨਹੀਂ ਉਹ ਤਾਂ ਤੇ। ਮੇਰੇ ਉਪਰ ਨਹੀਂ ਕੋਈ ਗੱਲ ਖਾਸ ਹੈਗੀ। ਉਹ ਪਿਆ ਸਾਰਿਆਂ ਨੂੰ ਲੱਗਦੀ ਸੀ। ਲੱਗਣੀ ਉਹ ਨੈਚੁਰਲ ਗੱਲ ਹੈ। ਉਹ ਕੁਦਰਤੀ ਗੱਲ ਪਰ ਜਿਹੜੀ ਸਾਨੂੰ ਗਾਹਾਂ ਸਿਖਾਈ ਹੈ ਦੋਹੀ ਗੱਲ ਸਮਾਜ ਨੇ ਸਿਖਾਈ ਉਹ ਆ ਤੇਰਾ ਮੇਰਾ ਮਾਏ ਆਪਾ ਉਹ ਸਾਰਾ ਜਿਹੜਾ ਦੁਰਮਤ ਫਿਰ ਆ ਇਥੋਂ ਮਤਲਬ ਹੈ ਗੁਰਦਾਰੇ ਜਾ ਤੇਰੇ ਨੰਬਰ ਚੰਗੇ ਆ ਜਾਣਗੇ ਚਲੋ ਬੜੀ ਨਰਦਾਸ ਕਰੀ ਅਰਦਾਸ ਕਰੀ ਉਹ ਕਰੀ ਉਹ ਜੋੜਦਾ ਸਿਰਫ ਸੰਸਾਰੀ ਸਾਡੇ ਪੂਰਤੀ ਨਾਲ ਆਤਮਾ ਛੱਡ ਕੇ ਆਤਮਾ ਨਹੀਂ ਕਰ ਸਕਦੀ ਆਤਮਿਕ ਲਾਭ ਛੱਡ ਕੇ ਪਦਾਰਥਕ ਲਾਭ ਨਾਲ ਜੋੜ ਦਿੱਤਾ ਜਾਂਦਾ ਹੈ ਉਹ ਇਹ ਦੁਰਵੱਤ ਹੈ ਦੂਰੇ ਦੂਰ ਲੈ ਜਾਈ ਤੁਹਾਨੂੰ ਸੱਚ ਤੋਂ ਇਹ ਸੱਚ ਨੂੰ ਛੱਡ ਕੇ ਝੂਠ ਨੂੰ ਜੋੜਦਾ ਨਿਕਲ ਵਾਇਆ ਝੂਠ ਹੈ ਨਾ ਵਾਇ ਦੇ ਜਿਹੜੇ ਪਦਾਰਥ ਨੇ पैदा हो ਭੁੱਖ ਪੈਦਾ ਹੋ ਜਾਣੀ ਔਰ ਭੁੱਖ ਵਧੀ ਜਾਣੀ ਵਧੀ ਜਾਣੀ ਵਧੀ ਜਾਣੀ ਇਹ ਦੁਰਮਤਤ ਬੰਦੀ ਹੈ ਇਹ ਸੱਚ ਤੋਂ ਦੂਰ ਹੋਈ ਜਾਂਦੀ ਹੈ ਇਹ ਦਾ ਸੰਬੰਧ ਫਿਰ ਜਿੰਨੀ ਜਾਇਦਾਦ ਇਕੱਠੀ ਕਰਦਾ ਹੈ ਬੱਚਿਆਂ ਖਾਤਰ ਕਰਦਾ ਗਾਹ ਐ ਪੱਕੀ ਆਪਣੀ ਦਾ ਕੁਰਸੀ ਹੈਗੀ ਮੁੰਡੇ ਦੀ ਵੀ ਕਰਦਾ ਮੇਰੇ ਪਿੱਛੇ ਇਹ ਵੀ ਹੋਵੇ ਵਜ਼ੀਰ ਬਣ ਇਹ ਆ ਜਹ ਜੀ ਮੈਂ ਕੀਤੀ ਚੱਲ ਮੈਂ ਤਾਂ ਤੰਗੀ ਵੀ ਕੀਤੀ ਹੋਏ ਲੋਕਾਂ ਤੰਗੀ ਆਏ ਰਾਜਾ ਕੋਈ ਪੰਜ ਸੱਤ ਪੁਸਤਾਂ ਤੱਕ ਕੱਲ ਨੂੰ ਕੀ ਹੋਣਾ ਕੀ ਨਹੀਂ ਹੋਣਾ ਦਾ ਲੱਗਦਾ ਪਰ ਜੀ ਉਸ ਬਾਅਦ ਕੀ ਹੋਇਆ ਉਹਦੇ ਪਰਿਵਾਰ ਨੂੰ ਤਾਂ ਨਾਲ ਗੱਲ ਪਰ ਉਹ ਤਾਂ ਬਹੁਤ ਮਜਬੂਤ ਕਰ ਰਿਹਾ ਸੀ। ਉਹਦਾ ਤਾਂ ਸੱਜਿਬੀ ਗੁਰਦੁਆਰੇ ਇਹਨਾਂ ਨੂੰ ਸੋਨਾ ਦੇ ਦਿੰਦੇ ਤੇਰੀਆਂ ਇੰਨੀਆਂ ਪੁਛਤਾ ਕਾਟਾ ਜੀ ਰੇੜ। ਉਹਨੂੰ ਕੀ ਪਤਾ ਜੀ ਪਿੱਛੋਂ ਕੀ ਹੋਣਾ। ਨਾਲ ਦੀ ਨਾਲੇ ਜੜਪੱਟੀ ਗਈ। ਕੋਕ ਉਹਨੇ ਸਿੱਖ ਦੀ ਜੜਪੱਟੀ ਸੀ ਨਾ। ਸਿੱਖ ਦੀ ਜੜ ਤੇਲ ਪਾਇਆ ਜੀ ਉਹਦੀ ਜਾਣ ਕੇ ਰਹਿ ਜਾਂਦੀ। ਸਜਾ ਨਾਲ ਦੀ ਨਾਲ ਮਿਲ ਗਈ ਜੇ ਰਾਜ ਖਾਲਸਾ ਦਾ ਸੀ ਤੇ ਜਾ ਨਹੀਂ ਸਕਦਾ ਕਿ ਕੋਈ ਲੋਈ ਉਹ ਗੱਲ ਕਹੀ 14 ਰਾਜ ਕਹਿੰਦਾ 14 ਫਿਰ ਇਹ ਦੋਰੇ ਦਿੱਲੀ ਤਖਤ ਬਹਿ ਗਿਆ ਆਪ ਨੂੰ ਐਵੇਂ ਕਰ ਨਹੀਂ ਉਹ 1400 ਤੱਕ ਹੈਗਾ ਉਹ ਨਹੀਂ ਐਵੇਂ ਉਹ ਕਰਦੀ ਨਾ ਉਹ ਕਿਤੇ ਦਰਜ ਨਹੀਂ ਹੋਣਾ ਕਿਸੇ ਕੋਲ ਖਾਲਸਾ ਰਾਜ ਸੀ ਜਾਣੀ ਸੀ ਖਾਲਸਾ ਤਾਂ ਖਾਲਸਾ ਰਾਜ ਹੈ ਨਹੀਂ ਕਦੇ ਰਾਜ ਹੈ ਨਹੀਂ ਸੰਸਾਰ ਕਰਦਾ ਜੇ ਕਰਦਾ ਤਾਂ ਪਰਮੇਸ਼ਰ ਕਰਦਾ ਉਹ ਖਾਲਸਾ ਸੱਚ ਦਾ ਝੰਡਾ ਵਰਦਾਰ ਹੁੰਦਾ ਜਿਹੜਾ ਇੱਥੇ ਖਾਲਸਾ ਨਾ ਕਾਲਤਾ ਕਾਲਪੁਰ ਕੀ ਫੌਜ ਹੈ ਫੌਜ ਰਾਜਾ ਨਹੀਂ ਹੁੰਦੀ ਫੌਜ ਰਾਜਾ ਦੀ ਹੈ ਬ੍ਰਹਮਾ ਨੰਦ ਦੀ ਫੌਜ ਰਾਜ ਕਰੇ ਤਾਂ ਇਹ ਫੌਜ ਹੈ ਉਹ ਝੰਡਾ ਬਰਧਾਰ ਹੈ ਸੱਚ ਦਾ ਪਹਿਰੇਦਾਰ ਹੈ ਸੱਚ ਦਾ ਰਾਜ ਰੱਖਣਾ ਹੈ ਸੱਚ ਦਾ ਸੱਚ ਖੜੇ ਇਨਸਾਫ ਦਾ ਹੱਕ ਇਨਸਾਫ ਦਾ ਰਾਜ ਰੱਖਣਾ ਹੈ ਰਾਜ ਅਦੀ ਦੇ ਗਦੀ ਤੇ ਕੀ ਬਠੂ ਗਦੀ ਤੇ ਸੁਣਦਾ ਗੱਦੀ ਤੇ ਸੁਧਾਨ ਬੈਠੂਗਾ ਨਾ ਗੱਦੀ ਤੇ ਬੈਠਾ ਸੱਚਖੰਡ ਕੋਈ ਗੱਦੀ ਤੇ ਨਹੀਂ ਬੈਠਾ ਸਾਰੇ ਬਰਾਬਰ ਨੇ ਕੋਈ ਬੰਦਾ ਉੱਥੇ ਰਾਜਾ ਨਹੀਂ ਹੈ ਕੋਈ ਉਹ ਹੀ ਗੁਰੂ ਰਿਹਾ ਗੁਰੂ ਨਾਲ ਦੇ ਨੇ ਸਾਰੇ ਬਰਾਬਰ ਨੇ ਕੋਈ ਬڑا ਛੋਟਾ ਨਹੀਂ ਉਹ ਜਹਜ਼ਦਾਰ ਤਾਂ ਉਹ ਹੀ ਆ ਗੁਰੂ ਕਹੇ ਨੇ ਉਹ ਕੀ ਹੈ ਉਹਦੇ ਚ ਕੀ ਹੈ ਬڑا ਛੋਟਾ ਹੁੰਦਾ ਕੋਈ ਸਿਆਣਾ ਹੁੰਦਾ ਕੋਈ ਨਹੀਂ ਹੁੰਦਾ ਉਹਨੇ ਅਸੀਂ ਵੀ ਤਾਂ ਗੁਰੂ ਬਣਾਏ ਹੋਏ ਸੀ ਖਿਆਣੇ ਜੀ ਆਪਕੋ ਜਿਹੜੀ ਗੋਈ ਚੱਲਦੇ ਸੀ। ਕੰਮ ਜਮਾ ਰੋ ਤੇ ਮੰਤਰੀ ਉਹ ਭਾਈ ਕਹਿੰਦੇ ਨੇ ਐਸੇ ਕਰਕੇ ਭਾਈ ਕਹਿੰਦੇ ਨੇ। ਸਿੱਖ ਸਖਾ ਬੰਦ ਵੇ ਭਾਈ। ਅਛੇ ਰਹੇ ਨੇ। ਸੋ ਭਾਈ ਸੋ ਮੇਰਾ ਵੀਰ। ਮੇਰੇ ਹਰਪਰਖ ਦੀ ਕੋਈ ਬਾਤ ਸੁਣਾਵੇ। ਸੱਚ ਵਾਲਾ ਗੁਰੂ ਲਾਗੂ ਰਹਿੰਦਾ ਇੱਥੇ। ਬਦਲ ਨਹੀਂ ਸਕਦੇ ਅਸੀਂ ਇੱਥੇ ਕਤੂਤ ਕੋਈ ਵੀ। ਪਤਾ ਹੀ ਨਹੀਂ ਵਿਚੇਲਾ ਗੁਰੂ ਕਿਉਂ ਨਹੀਂ ਹੁੰਦਾ। ਸਾਧਾਨੇ ਵੀ ਗੁਰੂ ਜੇਦਾਰੀ ਹੈ ਕੋਈ ਵੀ ਗੁਰੂ ਦਾ ਅਰਥ ਹੈ ਹੋਰ ਗੁਰੂ ਦਾ ਅਰਥ ਹੈ ਜਿਹੜੇ ਚਾਨਣ ਕਰੇ ਗੁਰੂ ਦਾ ਅਸਾਂ ਨਰੇ ਜਿਹੜਾ ਮਤਾ ਸੰਗਤ ਇਸੇ ਨੇ ਰਾਹ ਖੋਲੋ ਸੰਧਾਨਤਾ ਹੈ ਸਭ ਵਾਕੀ ਲਾਗੂ ਕਰਨ ਵਾਲੇ ਨੇ ਸੰਧਾਨ ਦੀ ਰਾਸ਼ਟਰਪਤੀ ਵੀ ਕਸਮ ਖਾਂਦਾ ਹੈ ਸੁਪਰੀਮ ਕੋਰਟ ਦਾ ਜੱਜ ਵੀ ਕਸਮ ਖਾਂਦਾ ਹੈ ਸਾਰੇ ਐਮਐਲਏ ਵੀ ਕਸਮ ਖਾਂਦੇ ਨੇ ਸਾਰੇ ਐਮਪੀ ਵੀ ਕਸਮ ਖਾਂਦੇ ਨੇ ਪ੍ਰਾਈਮ ਵੀ ਕਸਮ ਖਾਂਦਾ ਹੈ ਸੁਣਨਾ ਆਨੇ ਉਪਰੇ ਸੁਪਰੀਮ ਦਾ ਫਿਰ ਸਰਧਾਨਾ ਹੋਇਆ ਸੁਵਧਾਨੇ ਬਣਿਆ ਹੋਇਆ ਤਾਂ ਸਭ ਦਾ ਗੁਰੂ ਹੈ ਸਭ ਗੁਰੂ ਹੈ ਸਾਡਾ ਸੁਵਧਾਨ ਪਰ ਸਭ ਦਾ ਆਂਦੇ ਯਾਰਸਲ ਟਾਲ ਕੇ ਫਿਰ ਫਿਰ ਕਿਹ ਹੈ ਜੰਦਰ ਇਹ ਗੱਲ ਕਹਿਣ ਨਾਲ ਸ਼ਬਦੂਰ ਹੋਇਆ ਨਹੀਂ ਗੱਲ ਬਣਦੀ ਅਰਥਾਂ ਦੇ ਜਾਂ ਅਰਥ ਕਰ ਲੈ ਫੇ ਸਮਝਾਣਾ ਹੈ ਕਿ ਸਬਤਾਂ ਦੀ ਵੀ ਵਿਆਖਿਆ ਕਰਨੀ ਕੋ ਤੁਹਾਨੂੰ ਗਲਤ ਵਿਆਖਿਆ ਨਾਲ ਗਲਤ ਫੈਸਲੇ ਲੈਂਦੇ ਨੇ ਥੱਲੇ ਵਾਲੇ ਜੱਜ ਗਲਤ ਫੈਸਲਾ ਕਰਦੇ ਨੇ ਸੁਪਰੀਮ ਕੋਰਟ ਉਹਦੀ ਵਿਆਖਿਆ ਕਰਨ ਇਹ ਗਲਤ ਹੋ ਗਿਆ ਐ ਨਹੀਂ ਐ ਕਹੀਦਾ ਸੀ ਸਮਝਾ ਆਂਦੀ ਵਿਆਖਿਆ ਨਾਲ ਗਲਤ ਫੈਸਲੇ ਹੁੰਦੇ ਨੇ ਗਲਤ ਹਨ ਜਿੰਨਾ ਜੇ ਤੁਹਾਨੂੰ ਸਮਝਾਂ ਦੀ ਵਿਆਖਿਆ ਸਹੀ ਨਹੀਂ ਉਹ ਫੈਸਲੇ ਗਲਤ ਹੁੰਦੇ ਰਹੇਗੇ ਗੁਰਬਾਣੀ ਦੀ ਵਿਆਖਿਆ ਨਾਲ ਹੀ ਤੁਹਾਨੂੰ ਰਸਮਾਰਗ ਮਿਲਣਾ ਸਹੀ ਵਿਆਖਿਆ ਨਾਲ ਸਹੀ ਮਾਰਗ ਹੈ ਗਲਤ ਵਿਆਖਿਆ ਨਾਲ ਦੇਸ਼ਾਹੀਨ ਹੋ ਜਾਗੇ ਕਿੰਨੀ ਇੰਪੋਰਟੈਂਟ ਹੈ ਦੀ ਵਿਆਖਿਆ ਮਾਰਗ ਭੁੱਲ ਜਾਓਗੇ ਰਾਹ ਛੱਡ ਜਾਓਗੇ ਤੇ ਤੁਸੀਂ ਨਾਖੇ ਦਾ ਉੱਤਰ ਵਾਲਾ ਪਾਸਾ ਥੱਲੇ ਕਰ ਲੋ ਦੱਖਣ ਵਾਲੇ ਉੱਤੇ ਕਰ ਲੋ ਤੇ ਪੂਰਬ ਪੱਛਮ ਪਛ ਪੂਰਬੜ ਜੂਗੀ ਸਾਰਾ ਕੁਝ ਜੈਨੇਰ ਹੈ ਸਾਰਾ ਕੁਝ ਹੈ ਇਹ ਹੋ ਗਿਆ ਜਿਹਨੂੰ ਪਤਾ ਸੀ ਉਹਨੇ ਕਰਤਾ ਸੋਤਾ ਖੋਇਆ ਉਹਨੂੰ ਨਹੀਂ ਪਤਾ ਲੱਗਿਆ ਬੇਜਾਦਾ ਹੋ ਗਿਆ ਵੇਸੋ ਤੇਰਾ ਬਾਹਰ ਜਾ ਰਿਹਾ ਗਿਆ ਪਾਦੁੰਦਾ ਜਿਆਣਾ ਸੋਤਾ ਉਹ ਕੇ ਜੇ ਪੈਸਵਾਰੀ ਨੂੰ ਵੀ ਪਤਾ ਚਰਾਬੇ ਨੂੰ ਪੈਸ ਪਾ ਦੀ ਐ ਸਰਾਨੇ ਬਾਦੀ ਉਹਨੂੰ ਕੀ ਪਤਾ ਉੱਠੇ ਦੇ ਪਤਾ ਲੱਗਦਾ ਨਸ਼ੇ ਦੁਰਮਾ ਤਾੜੇ ਨਸ਼ੇ ਚਾਹੇ ਕੋਸ ਕ੍ਰੋਧ ਕਟੋਰੀ ਮੋਹ ਭਰੀ ਕ੍ਰੋਧ ਤੋਂ ਅਹੰਕਾਰ ਹੰਕਾਰ ਫਿਲਾ ਰਿਹਾ ਸਾਰੇ ਪ੍ਰਧਾਨ ਆ ਗਏ ਉਹਨੇ ਤੇ ਅਹੰਕਾਰ ਕ੍ਰੋਧ ਵੜੋwidehat ਦੁੰਦਰ ਕੋਲ ਕਰੋਧ ਪ੍ਰધાન ਵੜੋwidehat ਦੁੰਦਰ ਤੇ ਮਨਵਾਵਾਸੀ ਰਜਾ ਇਥੇ ਮਨ ਰਾਜਾ ਆਪ ਹੈ ਮਰਜੀ ਕਰਦਾ ਹੈ ਮਰਜੀ ਕਰ ਪਰ ਨਿਰਕਾਰ ਦੇ ਦੇਸ ਵਿੱਚ ਰਾਜਾ ਹੋਇਆ ਜਿਹੜਾ ਮਰਜੀ ਛੱਡ ਦਵੇ ਸੰਸਾਰ ਜ ਮਰਜੀ ਕਰਨ ਵਾਸਤੇ ਅਸੀਂ ਲੜਦੇ ਆਂ ਮੇਰੀ ਮਰਜੀ ਚੱਲੇ ਔਰ ਗੁਰਮੁਖ ਮੰਨ ਨਾਲ ਲੜਦੇ ਨੇ ਵੀ ਮਰਜ਼ੀ ਛੱਡਦੇ ਜੇ ਬਚਣਾ ਤਾਂ ਮਰਜ਼ੀ ਛੱਡਦੇ ਜੇ ਸੁੱਖ ਚਾਹਣਾ ਤਾਂ ਮਰਜ਼ੀ ਛੱਡਦੇ ਜੇ ਸਦਾ ਸੁੱਖ ਚਾਹਣਾ ਤਾਂ ਮਰਜ਼ੀ ਛੱਡਦੇ ਇਹ ਕਹਿੰਦਾ ਮੇਰੀ ਮਰਜ਼ੀ ਸੁੱਖ ਹੈ ਵਰਬਾਣੀ ਕਹਿੰਦੀ ਤੇਰੀ ਮਰਜ਼ੀ ਚ ਦੁੱਖ ਹੈ 180 ਡਿਗਰੀ ਦਾ ਫਰਕ ਹੈ ਸੋਚਦਾ ਜੇ ਸੁੱਖ ਚਾਹਿਆ ਸਦਾ ਕਰ ਰਿਹਾ ਉਹ ਕਿਲੇ ਬੁਰ ਬਾਣੀ ਕਹਿੰਦੀ ਹੈ ਤੇਰੀ ਮਰਜ਼ੀ ਚ ਦੁੱਖ ਹੈ ਗੁਰੂ ਕਹਿੰਦਾ ਤੇਰੀ ਮਰਜ਼ੀ ਚ ਦੁੱਖ ਹੈ ਇਹ ਕਹਿੰਦਾ ਮੇਰੀ ਮਰਜ਼ੀ ਚ ਸੁੱਖ ਹੈ 180 ਡਿਗਰੀ ਦਾ ਫਰਕ ਹੈ ਗੁਰੂ ਦਾ ਇਕਦਾਂ ਇਹਨੂੰ ਆਊਟ ਆਪਣੀ ਮਰਜ਼ੀ ਦਾ ਸੁੱਖ ਹੈ ਜਿਹੜੇ ਇਹ ਮੰਨਦੇ ਨੇ ਇਸੇ ਦਾ ਸੰਸਾਰ ਚ ਕਲੇਸ਼ ਆ ਘਰ ਘਰ ਕਲੇਸ਼ ਇਸੇ ਕਲਦ ਭਾਈਆਂ ਦਾ ਹੋਵੇ ਮਾਪੇ ਦਾ ਹੋਵੇ ਫੇਓ ਪੁੱਤ ਦਾ ਹੋਵੇ ਆਦਮੀ ਔਰਤ ਦਾ ਹੋਵੇ ਭੈਣਾਂ ਦਾ ਹੋਵੇ ਜਾਂ ਕਿਸੇ ਦਾ ਵੀ ਹੋਵੇ ਮਿੱਤਰਾਂ ਦੋਸਤਾਂ ਦਾ ਹੋਵੇ ਗੁਮੰਡੀਆਂ ਦਾ ਕਿਸੇ ਦਾ ਵੀ ਹੋਵੇ ਮਰਜ਼ੀ ਆਪਣੀ ਮਰਜ਼ੀ ਬਸ ਕਲੇਸ਼ ਦਾ ਹੈ ਇੱਥੇ ਕਲੇਸ਼ ਪੈਦਾ ਕਰਨਾ ਪਾਪ ਹੈ ਪਾਪ ਹੈ ਕਲੇਸ਼ ਜਿਹੇ ਪਾਪ ਫੈਦਾ ਕਰੋਧ ਵੀ ਉੱਥੋਂ ਪੈਦਾ ਹੋਇਆ ਜੋ ਲੋਭ ਵੀ ਉੱਥੇ ਹੈ ਸਾਰੇ ਉੱਥੇ ਰਹਣੇ ਨੇ ਜਿੱਤੇ ਇਹ ਜਿੱਤੇ ਜੰਗ ਹੋਊ ਉੱਥੇ ਬਹਰ ਹੋਣੇ ਰਿਓ ਸ਼ਿਵ ਦੇ ਜਿਹੜੇ ਗੱਲ ਨੇ ਇਹਨੂੰ ਸ਼ਿਵਜੀ ਦੇ ਗਣ ਕਹੇ ਸਾਰੇ ਹੀ ਕਿ ਜੰਗ ਜੋਇ ਨੇ ਵੱਟ ਟੁਕ ਜੋਇ ਕਰਾਉਂਦੇ ਨੇ ਉਹ ਖਤਰਬਾਟ ਟੁਕ ਹੰਕਾਰ ਦੀ ਵੱਟ ਟੁਕ ਆਇਆ ਇਹ ਆਪਣੀ ਮਰਜ਼ੀ ਦੇ ਸਪੋਰਟਰ ਨੇ ਸਪੋਰਟਰ ਮਜਲਸ ਕੂੜੇ ਲੱਭ ਗਈ ਕੀ ਹੈ ਮੰਦੇ ਕੋਲ ਕੋਣ ਕੋਣ ਬਹਿੰਦਾ ਮੰਦਾ ਸਲਾਹ ਮਜਲਿਸ ਹੁੰਦਾ ਜਿਹੜਾ ਰਾਇ ਦੇਣ ਵਾਲਾ ਹੈ ਸਰੂ ਜਿਹੜਾ ਰਾਇ ਦਿੰਦਾ ਹੈ ਨਾ ਕਾਲੀ ਬੂਗਮਾਰ ਦਾ ਜਿਵੇਂ ਕਹਿੰਦਾ ਕਿ ਇਹਦੇ ਲੀਡਰ ਉਹ ਮਜਲਿਸ ਹੁੰਦੀ ਹੁੰਦੀ ਸਲਾਹ ਦੇ ਸਲਾਹੀਏ ਡਬਲ ਸਲਾਹੀਏ ਸਲਾਹੀ ਲੱਭ ਕੇ ਕੋਲੇ ਲਾਭ ਇਹਨੂੰ ਸਲਾਹ ਦਿੰਦਾ ਇਹ ਕਰਨਾ ਆਪਾਂ ਨੂੰ ਇਹ ਫਾਇਦਾ ਹੈ ਕੂੜੇ ਲੱਭ। ਹੋਰ ਪ੍ਰਸਾਦੀ ਆਖ ਕੇ ਕਹਿੰਦਾ ਵੀ ਮੈਨੂੰ ਚਾਹੀਦਾ। ਕੂੜੇ ਲੱਭ ਨਹੀਂ ਦਿਨ ਵਿੱਚ। ਚਾਣਣੀ ਮੈਨੂੰ ਚਾਹੀਦੀ। ਬਰਦਾਸ਼ਤ ਨਹੀਂ ਕਰ ਸਕਿਆ ਮਹਾਰਾਜਾ। ਮੇਰੇ ਕੋਲੇ ਦੋ ਚੀਜ਼ਾਂ ਨਹੀਂ ਹੁਣ। ਗੁਰੂ ਘਰ ਦੀ ਦੋ ਚੀਜ਼ਾਂ ਨੇ। ਮੈਂ ਲੈਣਾ ਯਾ ਉਹ ਲੈ ਲਾ ਫਿਰ ਮੁਕਰ ਜਾ ਕੀ ਸੀ ਮਜਰਸ ਕੂੜੇ ਲੱਗ ਕੀ ਸੀ ਇਹ ਚੀਜ਼ਾਂ ਹਾਸਲ ਕਰ ਲੈ ਲੜਕੇ ਤਾਂ ਕਰ ਦੇ ਸਕਦਾ ਲੈ ਜਾਂਦੇ ਹੋਏ ਮੁਕਰ ਮੰਗਦਾ ਸੀ ਉਹ ਰਾਜਾ ਪਾਲੇ ਪੰਚੀਆ ਸੀ ਪਾਹੋ ਆ ਪਪੜੇ ਕਜਲ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖਵਾਰ ਪੀ ਪੀ ਹੋਏ ਖਵਾਰ ਲੋਭ ਦਾ ਜਿਹੜਾ ਹੈ ਨਾ ਇੱਛਾ ਵਾ ਲੋਭ ਦੀ ਪੂਰਤੀ ਕਿੰਨੀ ਕਰ ਲੋਏ ਫਿਰ ਉਹ ਵਧੀ ਜਾਂਦਾ ਜਿੰਨਾ ਮਰਜੀ ਪੀ ਜਾਓ ਚਸ਼ਮੇ ਚ ਪਾਣੀ ਦਰਿਆ ਦਾ ਪਾਣੀ ਕਰਨਾ ਕੋਈ ਜਾਊ ਪੀ ਪੀ ਹੋਦਾ ਦਰਿਆ ਹੈ ਜਿਉ ਪਾਵਕ ਤੂ ਬਾਹਨ ਹੁੰਦਾ ਪਾਣੀ ਪੀ ਲੈਣਾ कि ਗੇ ਇੱਛਾਵਨ ਪੂਰੀਆਂ ਕਰਦੇ ਉਹ ਤਾਂ ਹੜਬਗਦਾ ਇੱਛਾ ਜਿੰਨੀਆਂ ਪੂਰੀਆਂ ਕਰਦਾ ਉਹਨਾਂ ਹੜ ਹੋਰ ਵਜੋਂ ਤੇਜ਼ ਘਟਦੀਆਂ ਨਹੀਂ ਸਭ ਵਧਦੀਆਂ ਸ਼ਾਇਦ ਘਟੇ ਲੱਖ ਕੋੜ ਤੋਰ ਤੱਕਾ ਲੱਖ ਕੋੜ ਤੋਰ ਕਰਨੀ ਲਾਹਣ ਸਤ ਗੁਰ ਸੱਚ ਸਰਾਕਰ ਸਾਰ ਕਰਨੀਏ ਜਿਹੜੀ ਇਹ ਲਾਹਣ ਸਤ ਗੁਰ ਜੋ ਕੁਝ ਕੋੜ ਜਾਂਦਾ ਸਭ ਕੁਝ ਹੋ ਜਾਂਦਾ ਲਾਣ ਜਾਂਦਾ ਨੂੰ ਜਿਹਦੇ ਵਿੱਚ ਘੋਲਦੇ ਆ ਪਾਣੀ ਘੋਲਦੇ ਆ ਕਿਕਰ ਦਾ ਸਾਕਿਆ ਹੋਰ ਉਰਾ ਪਰਾ ਪਾ ਕੇ ਉਹ ਲਾਣ ਬਣੋ ਜੀ ਸ਼ਰਮ ਕਰਦੇ ਸ਼ਰਮ ਤੋਂ ਪਹਿਲਾਂ ਦੁਰਮਤ ਇੱਥੋਂ ਨਿਕਲ ਵੀ ਆ ਇਹਨਾਂ ਚੀਜ਼ਾਂ ਚੋਂ ਸਾਰੀਆਂ ਚੋਂ ਦੁਰਮਤ ਪੈਦਾ ਹੋਊਗੀ ਦੁਰਮਤ ਮੰਦ ਨਹੀਂ ਪੈਦਾ ਕਰਨੀ ਸਭ ਕੁਝ ਪੈਦਾ ਵਿੱਚ ਜਿਹੜਾ ਸਾਰ ਨਿਕਲੂ ਹਿੰ ਅਰਕ ਇਹਦਾ ਜਿਹੜਾ ਸਾਰ ਨਿਕੂ ਨਾ ਸਾਲ ਕੱਟ ਉਹ ਦੁਰਮਤ ਹੋ ਜੀ ਹੈ ਜੀ ਕਰਨੀ ਲਾਹਣ ਸਤ ਗੁਰ ਸੱਚ ਸਰਾਕਰ ਸਾਰ ਅੱਛਾ ਜੇ ਕਰਨੀ ਲਾਹਣ ਸਤ ਗੁਰ ਹੋਵੇ ਦੂਈ ਬਦਲਦੀ ਏ ਜੋ ਕਰਨੀ ਹੈ ਸਾਡੀ ਹੁਕਮ ਦੇ ਵਿੱਚ ਪਾੜੇ ਚੱਲੀਏ ਹੁਕਮ ਦੇ ਪਾੜੇ ਤੇ ਤਾਲ सच सारा फिर सच शराब निकलूगी शराब शराब नु कह दे सत चे शराब गुण बाहरा जिस वजह सच्चा हो तेस वजह सच्चा रहो फिर मत बदलजूगी फिर बोलबो तोजूगी फिर दूरवा दे जगह बोलबो तोजूगी करनी लाहन वो भी शराब है भी नशा दूरमदा नशा है ਉਹਨਾਂ ਦਾ ਰਜਾ ਟਕਾਉ ਹੈ ਦੋਏ ਰਜਾ ਟਕਰਾ ਜਾਂਦੇ ਉਹ ਰਾਜ ਨੂੰ ਰਾਜਾ ਸਮਝਦਾ ਹੀ ਨਹੀਂ ਤੇ ਆਪ ਦੇ ਰਜਾ ਰਾਜਾ ਸਮਝਦਾ ਅਮਰ ਤੇ ਉਹ ਵੀ ਖੈਰ ਦਾ ਫਿਰ ਇਹ ਰਾਜੇ ਸੰਤ ਵਿਚਾਰ ਕੇ ਝੂਠੇ ਕਰਦੇ ਦੁਆਜਾ ਰਾਜਾ ਤੜਫ ਜਾਂਦਾ ਉਹ ਵੀ ਬੋਲਦਾ ਸਾਡਾ ਜੀ ਬੋਲਦੇ ਉਹ ਆਪਣਾ ਰਜਾ ਉਹਦਾ ਜਿਹੜਾ ਵੱਡਾ ਰਾਜਾ ਉਹਦੇ ਨਾਲ ਸੰਪਰਕ ਹੋ ਗਿਆ ਉਹਨੇ ਰਾਜਾ ਦੇਖ ਲਿਆ ਹੈ ਕੌਣ ਉਹਨੇ ਹੁਕਮ ਦੇਖ ਲਿਆ ਚੱਲਦਾ ਕੀਦਾ ਇਹ ਤਾਂ ਰੋਲੋ ਪੋਲ ਹੈ ਸਾਰਾ ਸਮਾਨ ਹੀ ਆ ਜਾਦਾ ਸਮਝ ਆ ਗਈ ਹੁਕਮ ਦੀ ਸੰਸਾਰ ਚੱਲਦਾ ਕੀਦਾ ਸੰਸਾਰ ਚ ਹੁਕਮ ਕਿਦਾ ਚੱਲਦਾ ਕੀਦਾ ਜਾਂ ਉਹ ਸਮਝ ਗਈ ਕਹਿੰਦਾ ਹੈ ਕਿ ਕਰਦਾ ਰਾਜਾ ਹੈ ਨਹੀਂ ਇਹ ਕੋਈ ਦੁਨੀਆ ਨੂੰ ਕਹਿੰਦਾ ਰਾਜਾ ਹੈ ਨਹੀਂ ਉਹ ਕਹਿੰਦਾ ਵੀ ਇਹਨੂੰ ਸਮਝਾ ਦੋ ਰਾਜਾ ਮਨ ਲਵਾਂ ਕਹਿੰਦਾ ਮੈਂ ਮੰਨਾਂ ਕਿ ਮੈਂ ਝੂਠ ਬੋਲਣਾ ਪ੍ਰਥਵੀ ਜ਼ਮੀਨ ਗੋਲਿਆਰ ਘੁੰਮਦੀ ਹੈ ਮੈਂ ਕਿਵੇਂ ਮੰਨਾਂ ਜਦ ਘੁੰਮਦੀ ਹੈ ਉਹ ਕਹਿੰਦੇ ਕਹਦੇ ਜ਼ਮੀਨ ਚਪਤੀ ਹੈ ਉਹ ਕਹਿੰਦਾ ਮੇਰੇ ਕਹਦੇ ਕਿਹੜਾ ਚਪਤੀ ਹੋ ਜੂ ਕਹਿੰਦੇ ਪਰ ਤੂੰ ਇਹ ਨਾ ਕਹਿ ਸਾਡੇ ਇਹ ਕਹਾਂ ਉਹ ਕਹਿੰਦਾ ਜਾਂ ਹੈਗੀ ਹੈ ਜੀ ਉਹਨੂੰ ਦੇਖ ਕੇ ਕਹਿ ਰਿਹਾ ਉਹ ਬਿਨਾਂ ਦੇਖੇ ਨੇ ਕਹੀ ਇਹ ਸੀ ਗੱਲ ਸ਼ੌਕੀ ਹਾਂ ਅੱਪਾ ਦਾ ਇਹ ਪਾਣੀ ਦੇ ਉੱਤੇ ਚਟਾਈ ਨੇ ਦੱਸੀ ਘੁੰਮਦੀ ਦੇ ਉਹ ਕਹਿੰਦੇ ਇਹ ਨਾ ਕਾ ਸਾਡੇ ਤੁਹਾਨੂੰ ਜੀ ਲਿਖਿਆ ਜਾਂ ਹੈਗੀ ਹੈ ਲੈ ਗੱਲ ਹੈ ਸਰ ਉਹ ਜਮੀਨੇ ਦੇਖੀਏ ਨਾ ਜਿਹੜਾ ਸਾਜ ਨੂੰ ਉਹ ਦਇਗਲ ਵਿੱਚ ਉਦਾ ਹਾਕੂ ਨੂੰ ਦੇਖ ਰਿਹਾ ਕੋਕ ਮੈਂ ਕਹਿੰਦੇ ਇੱਕ ਸਹਯਦਾਨ ਨਹੀਂ ਮੰਨ ਰਿਹਾ ਕਿ ਦੇਖ ਕੇ ਉਹ ਧੂਆ ਕਿਵੇਂ ਮੰਨ ਲਵੇ ਉਹ ਗਾਇਨ ਰੇੜੇ ਚ ਪਾ ਲੋ ਗੰਨ ਪਾ ਦੋ ਇਹੋ ਕਹ ਸੱਚਾ ਵੀ ਜੈ ਨੂੰ ਹਰਸੀ ਵੀ ਦੇ ਦਿੱਤੀ ਫਿਰ ਦੁਨੀਆ ਦਾ ਬੱਲੂ ਵੀ ਜਮੀਨ ਉਹਨੂੰ ਫੰਸੀ ਦੇਤੀ ਉਹ ਸੱਚਾ ਹੋਰ ਉਹ ਪਰ ਵਿਚੇ ਸਮਝੌਤਾ ਕਰ ਰਿਹਾ ਵੀ ਤੂੰ ਯਾਰ ਕਹਿ ਰੇਂ ਕਿ ਕੀ ਐ ਆਪਣਾ ਧਰਮ ਦਾ ਰੁਖਸਾਰ ਹੁੰਦਾ ਤੂੰ ਸੱਚਾ ਤਾਂ ਤੂੰ ਹੀ ਐ ਪਰ ਆਪਣਾ ਰੁਖਸਾਰ ਹੁੰਦਾ ਆਪਣਾ ਧਰਮ ਦਾ ਇਹ ਚੰਗਾ ਨਹੀਂ ਲੱਗਦਾ ਉਹ ਉਹ ਚੰਗਾ ਮੈਂ ਇੰਨੀ ਗੱਲ ਕਹੂੰਗਾ ਐਦਾਂ ਨਹੀਂ ਮੈਂ ਕਹਿੰਦਾ ਚਪਟੀ ਹੈ ਵੀ ਇਹ ਤੁਸੀਂ ਕਹਿੰਦੇ ਹੋ ਮੈਂ ਕਹਿ ਦਿੰਨਾ ਚਾਹਤੀ ਪਰ ਜਮੀਨ ਕੋਲੇ ਜਿਵੇਂ ਤੱਕ ਉਹ ਲੈ ਫੇ। ਪਰ ਜੇ ਤੁਸੀਂ ਕਹਿੰਦੇ ਤਾਂ ਮੈਂ ਕਹਿ ਦਿੰਦਾ ਚੁੱਪੀ। ਐਨੀ ਗੱਲਾਂ ਗੋ ਕਰ ਜਾਂ ਲੈਣੀ ਉਹ ਕਹਿੰਦੇ। ਅਲ ਵਿਚਾਰਾਂ ਜਾਂ ਕਰ ਲਿਆ। ਤਾਂ ਰਾਜੀ ਨਾ ਕੀਤਾ। ਹੁਣ ਜਿਹੜਾ ਇਹਦਾ ਸੱਚ ਨੂੰ ਜਾਣ ਲੱਗਿਓ ਕਿਵੇਂ ਬੰਦੇ। ਬਹੁਤ ਮੁਸ਼ਕਲਾ ਬੰਦਾ। ਉਹ ਵੀ ਨਸ਼ੇ 'ਚ ਆਪਣੇ ਨਸ਼ੇ 'ਚ ਫਾਟੇਦਾਨ ਜਹਾਜ਼ ਕੂੜੇ ਦੇ ਰੇਖੇ ਨੂੰ ਬਹੁਤ ਜ਼ਿਆਦਾ ਹੁੰਦਾ ਉਹ ਵੇਸ਼ ਰਣ ਵਾਲਾ ਰੇਖਾ ਉਹ ਨੂੰ ਮੌਤ ਤੋਂ ਉੱਪਰ ਚਲਾ ਗਿਆ ਉਹ ਨੂੰ ਪਤਾ ਜੀ ਆਤਮਵਿਮਰਦੀ ਨਹੀਂ ਉਹ ਮੌਤ ਤੋਂ ਡਰਦਾ ਰਾਇਆ ਹੈ ਮੌਤ ਤੋਂ ਡਰਦਾ ਨਹੀਂ ਰੇਖਾ ਕਿਹਦਾ ਜ਼ਿਆਦਾ ਹੈ ਡਰਦਾ ਰਾਇਆ ਹੈ ਜ਼ਿਆਦਾ ਫਿਰ ਦੁਆਵੇਂ ਨਿਰਪੈ ਕਰਦਾ ਦੁਆਵੀ ਕਰਦਾ ਨਿਰਪੈ ਕਰਦਾ ਬਾੜਾ ਨਹੀਂ ਹੈ ਨਿਰਪੈ ਗੁਰੂ ਨੇ ਵੀ ਕਰਨਾ ਜੇ ਇਹੀ ਨਜਬ ਲਾ ਕੇ ਹੋਰ ਨਿਰਪੈ हो ਟਿਕਾ ਲਾਇਆ ਛੇਤੀ ਹੋ ਜੂ ਇਸ ਕਰਕੇ ਜਦੋਂ ਜੰਗ ਦੇ ਵਿੱਚ ਲੜਦੇ ਸੀਗੇ ਛੂਟ ਸੀਗੀ ਕੋਈ ਜਿਹੜਾ ਸ਼ਰਾਬ ਪੀ ਕੇ ਲੜ ਸਕਦਾ ਸ਼ਰਾਬੀ ਸਾਹਿਬ ਉਹ ਵੀ ਤਦ ਉਹ ਬਿਚਲੇ ਗੈਰ ਲੜਾ ਸੂਬ ਸੋਫੀ ਕਰਾਇ ਜਦ ਖੁਦ ਜਿਹੜੇ ਨਹੀਂ ਸੀ ਇਦਾਂ ਕਰ ਸਕਦੇ ਉਹਨਾਂ ਨੇ ਇੱਕ ਬਾਲੀ ਬਣਾਈ ਉਹ ਗਰਦੰਤੀ ਉਹਦਾ ਨੂੰ ਉਗਰਦੰਤੀ ਉਹਦੇ ਵਿੱਚ ਪੰਕਤੀਆਂ ਲਿਖੀਆਂ ਕਿ ਜਿਹੜਾ ਸੂਬ ਸੋਫੀ ਹੈ ਪੜਥੇਰਾ ਉਹ ਨਹੀਂ ਸੀ ਬਿੰਦੇ ਲੜਬੀ ਨਹੀਂ ਸਕਦਾ ਕਬਜ਼ ਮਰ ਕਮਜ਼ੋਰ ਹੋ ਜਾਂਦਾ ਲੜਦਾ ਕਿਉਂ ਨਹੀਂ ਸ਼ਰਾਬੀ ਤਾਰੀ ਲੜਦਾ ਲੂਗਤ ਉਹ ਗਾਇਦੇ ਜਿਹੜੇ ਨਹੀਂ ਪੀਂਦੇ ਆ ਬਾਣੀ ਪੜਿਆ ਕਰੋ ਤਾਂ ਲੜ ਸਕੂ ਨਹੀਂ ਲੜੀ ਸਕਦਾ ਉਹ ਰਖਤਰ ਬਗੰਤੀ ਬਾਣੀ ਪੜੇ ਤਰਦੀ ਲਿਖੀ ਲੜਾ ਸੁਬ ਜੋਪੀ ਕਰਾਜੁ ਦੁਕਰਦੁ ਸੁਬ ਜੋਪੀ ਕਰੋਧ ਦੇ ਵਿੱਚ ਹੋ ਕੇ ਜੰ ਕਰੂਗਾ ਗਿਆਨ ਦੇ ਵਿੱਚ ਹੋ ਕੇ ਨਹੀਂ ਜੰ ਕਰੂਗਾ ਗੁੱਸੇ ਚ ਆ ਕੇ ਜੰ ਕਰੂਗਾ ਕਰਾਜੁ ਦੁਕਰਦੁ ਕੁਤੋਂ ਤੇ ਕਰੋਧ ਹੈ ਹੁਣ ਨਾ ਸ਼ਰਾਫੀ ਤੇ ਜਦੋਂ ਬਾਣ ਲੱਗਾ ਤਵੇ ਉੱਥੇ ਰੋਸ ਹੈ ਗੁੱਸਾ ਨਹੀਂ ਹੈ ਰੋਸ ਹੋਰ ਗੱਲ ਹੁੰਦੀ ਹੈ ਰੋਸ ਗਿਆਨ ਵਾਲਾ ਹੁੰਦਾ ਹੈ ਰੋਸ ਹਾਂ ਵੀ ਤੋ ਹੁਕਮ ਤੋਂ ਬ੍ਰੋਧ ਮੈਨੂੰ ਮਾਰਨਾ ਚਾਹੁੰਦਾ ਜਾਂ ਮੈਨੂੰ ਮਾਰਕ ਨਹੀਂ ਮਾਰਦਾ ਮਾਰੇ ਕੋ ਰੋਸ ਹੈ ਰੋਸ ਹੋਰ ਗੱਲ ਹੈ ਗੁੱਸਾ ਹੋਰ ਗੱਲ ਕਰੋਧ ਹੋਰ ਗੱਲ ਕਿੰਨਾ ਫਰਕ ਹੈ ਕੱਪਸਾ ਦੇ ਵਿੱਚ ਉੱਥੇ ਰੋਸ ਲਿਖਿਆ ਤੇ ਗੁੱਸਾ ਲਿਖਿਆ ਤੁਹਾਨੂੰ ਕੋਈ ਅਲੱਗ ਲੱਗਦਾ ਕੋਈ ਨਹੀਂ ਆਇਆ ਰੋਸ ਹਰਥੇ ਲਿਖਿਆ ਹੈ ਨਜਾਇਜ਼ ਤੇ ਰੋਸ ਆਪਰੇ ਤੇ ਵੀ ਹੁੰਦਾ ਸਕੇ ਤੇ ਵੀ ਹੁੰਦਾ ਸਕੇ ਤੇ ਰੋਸ ਹੁੰਦਾ ਗੁੱਸਾ ਨਹੀਂ ਹੁੰਦਾ ਦੂਜੇ ਦਾ ਗੁੱਸਾ ਹੁੰਦਾ ਰੋਸ ਨਹੀਂ ਹੁੰਦਾ ਹੁੰਦਾ ਆਪਰੇ ਤੇ ਰੋਸ ਹੁੰਦਾ ਫਰਕ ਹੋਇਆ ਨਾ ਪਹਿਲੇ ਕੋਈ ਸੀ ਤਨ ਗੁਰੂ ਗੁਰੂ ਰੋਸ ਆਉ ਗੁੱਸਾ ਨਹੀਂ ਹੁੰਦਾ ਰੋਸ ਗਿਆਨ ਦੀ ਵਸਤਾ ਜਾਂਦਾ ਗਿਆਨ ਦੀ ਵਸਤਾ ਗਿਆਨ ਨੇ ਕੀ ਬੜਨੀ ਮਨੋ ਹਾਸਲੇ ਕਰ ਤਾ ਕੁਤਬਾਰ ਬਹਾਰੋ ਉਹਨਾਂ ਨੇ ਗਿਆਨ ਦੀ ਕੈਂਚੀ ਨਾਲ ਕਰ ਤਾ ਕੱਟ ਕੇ ਅਦਰੂ ਸਿੱਟੀਏ ਉਹਨਾਂ ਨੇ ਦਾਰੂ ਵੀ ਗੇ ਸਿੱਟੀ ਉਹ ਟਾਈਮਲੀ ਬਾਣੀ ਦਾ ਨਸ਼ਾ ਜਿਹੜਾ ਸਦਾ ਫਤਿਹਦਰ ਲਿਖ। ਫਤਿਹਦਰ ਲਿਖਾ। ਗੁਣ ਮੰਡੇ ਕਰ ਸੀਲ ਘੋ ਸ਼ਰਮ ਮਾਸ ਆਹਾਰ। ਗੁਣ ਮੰਡੇ ਕਰ। ਗੁਣ ਇੱਥੇ ਉੱਥੇ ਗੋੜ ਦੇ ਮੰਡੇ। ਥੋ ਗੋੜ ਦੇ। ਮੰਡੇ ਮੰਡੇ ਕੀ ਹੁੰਦੇ ਜੀ? ਵੱਡਾ ਕੋਲੀਆਂ ਨੂੰ ਕਹਿੰਦੇ ਰੋਟੀਆਂ। ਰੋਟੀਆਂ ਜੀਆਂ ਨੂੰ। ਆਪਣੇ ਉਹ ਵੀ ਪਕਾ ਲੈਂਦੇ ਸੀ ਉਹ। ਦਾ ਲਾ ਮੁੰਡੇ ਪਤਲੀਆਂ ਪਤਨੀਆਂ ਰੋਟੀਆਂ ਬਹੁਤ ਪਤਲੀਆਂ ਬਹੁਤ ਬੜੀਆਂ ਬੜੀਆਂ ਰੱਖਦੇ ਕੋਈ ਨਾ ਸੁਣਿਆ ਜੀ ਗੁਣ ਮੰਡੇ ਖਾਂਦਾ ਸੀ ਗੁਣ ਮੰਡੇ ਸੀਲ ਕੇ ਹੋ ਦੇ ਨਾਲ ਹੰਕਾਰ ਨਹੀਂ ਹੁੰਦੀ ਗੁਣਾ ਦੇ ਨਾਲ ਹੰਕਾਰ ਪੈਦਾ ਹੁੰਦਾ ਜਿਹੜੇ ਗੁਣਾ ਨਾਲ ਹੰਕਾਰ ਪੈਦਾ ਹੋਵੇ ਨਾ ਉਹ ਗੁਣ ਦੁਰਮਤ ਦੀ ਦੇਣ ਹੁੰਦੇ ਦੁਰਮਦਨੀ ਹਾਜ਼ਰੀ ਚ ਗੁਣਾ ਨੇ ਨਾਅ ਹੰਕਾਰ ਪੈਦਾ ਹੋ ਜਾਂਦਾ ਜਿਵੇਂ ਗਰਮੀ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਡੀਆਂ ਖਰਾਬ ਹੋ ਜਾਂਦੀਆਂ ਠੰਡੇ ਤੋਂ ਬਰਫ਼ ਤੇ ਰੱਖਦੀ ਉਹੀ ਚੀਜ਼ਾਂ ਖਰਾਬ ਹੋ ਜਾਂਦੀਆਂ ਉੱਥੇ ਸਾਰੇ ਕਰੋਧ ਸੀ ਅਗਨ ਸੀ ਉਧਰ ਦੂਏ ਪਾਸੇ ਉੱਥੇ ਗੁਣ ਵੀ ਜਿਹੜੇ ਨੇ ਗਲ ਜਾਂਦੇ ਨੇ ਹਰ ਵਿੱਚ ਤੇਰੇ ਗੁਣ ਕੋਈ ਨਹੀਂ ਕੋਈ ਨਹੀਂ ਐ ਵੀ ਮਦਬੂਹ ਛੱਡ ਜਾਂਦੇ ਪਰ ਇੱਥੇ ਗੁਣ ਖਰਾਬ ਨਹੀਂ ਹੁੰਦੇ ਗੁਣਾ ਦੇ ਮੰਡੇ ਹੋਣਗੇ ਸੀਲ ਕੇ ਤਾਂ ਇਹ ਠੀਕ ਰਹਿਣਗੇ ਜੇ ਸ਼ੀਤਲਤਾ ਦੇ ਤੱਤ ਨਾਲ ਚੋਪੜੇ ਹੋਣੇ ਹੈ ਕਿ ਗੁਣ ਡਰ ਜਿਹੜਾ ਤੱਤ ਗਿਆ ਨਾ ਇਹਨੂੰ ਠੱਡੇ ਰੱਖੂਗਾ ਗੁਣ ਹੁੰਦੇ ਆ ਵੀ ਹੰਕਾਰ ਨਹੀਂ ਹੰਕਾਰ ਨਹੀਂ ਉਹ ਸਭ ਕੁੜ ਤੇਰੇ ਉਹ ਮੇਰੇ ਨੀਰ ਹਾਗੇ ਜੇ 10 ਕਰੋੜ ਦੇ ਉਹ ਤੇ ਖਜ਼ਾਨੇ ਤੇ ਬੈਠਾ ਹੈ ਜਾਨ ਜੀ ਪਰ ਉਹਦਾ ਹੰਕਾਰ ਕਿਵੇਂ ਆਜੂ ਕਿਉਂਕਿ ਉਹਦੇ ਥੋੜੀ ਨੇ ਜੇ ਉਹਦੇ ਹੁਣ 10 ਕਰੋੜ ਫੇਰ ਉਹ ਜਣਾ ਸੁਭਾਅ ਕਰ ਇਹ ਆਪਣੇ ਹੋ ਲਈ ਗਏ ਉਦੋਂ ਹੋ ਜਾਣਾ ਸੁਭਾਵਿਕ ਗੱਲ ਹੈ ਨਸ਼ਾ ਹੋ ਜਾਣਾ ਪੈਸੇ ਦਾ ਪਰ ਪੈਸਾ ਕਿਸੇ ਦਾ ਉਹ ਜਿਹੜਾ ਮੋਦੀ ਸੀ ਗੁਰੂ ਘਰ ਦੇ ਵਿੱਚ ਉਹਦੇ ਕੋਲ ਹੁੰਦਾ ਸੀ ਸਾਰਾ ਇਹ ਕਾਲ ਖਜ਼ਾਨਾ ਖਜ਼ਾਂਚੀ ਮੋਦੀ ਕਹਿੰਦੇ ਸੀ ਉਹਨੂੰ ਉਹਦੇ ਕੋਲ ਖਜ਼ਾਨਾ ਸਾਰਾ ਹੁੰਦਾ ਸੀ ਜਿਵੇਂ ਨਾਲ ਜੀ ਹੋਇਆ ਹੋਰ ਸਾਰਾ ਹੋਇਆ ਖਜ਼ਾਂਚੀ ਹੁਣ ਆਪਾਂ ਕਹਿੰਦੇ ਉਹ ਮੋਦੀ ਕਹਿੰਦੇ ਸੀ ਬੁੱਧੀ ਮਾਲ ਕਰਦੀ ਹੈ ਨੌਕਰਾਂ ਮਾਲ ਤਾਂ ਮਾਲ ਕਰੇ ਤਾਂ ਨੌਕਰੀ ਕਰਦਾ ਇਹ ਆ ਨਜਰਾਫ ਗੁਣਾ ਦਾ ਸਭ ਕੁਣ ਤੇਰੇ ਬਿਨਾਂ ਹੀ ਕੋਇ ਵੇੜਾ ਦਾ ਕੋਈ ਗੁਣ ਹੈ ਨਹੀਂ ਫਿਰ ਹੰਕਾਰ ਕਿ ਮਿਲੂ ਇਹ ਗੱਲ ਜਿਹੜੀ ਹੈ ਨਾ ਖਿਆਲ ਜਿਹੜਾ ਹੈਗਾ ਇਹ ਸਭ ਕੁਣ ਤੇਰੇ ਇਹ ਠੰਡਾ ਰੱਖਦਾ ਗੁਣਾ ਨੂੰ ਤੇ ਜਿਵੇਂ ਫ੍ਰੀਜ 'ਚ ਪਾਈ ਜੀ ਜਾ ਇਹ ਲੋਕੋਂ ਕਰਮ ਹੋ ਜਾਂਦੇ ਨੇ ਫੇਰ ਵਰਵਾਈ ਕਰ ਦਿੰਦੇ ਨੇ ਗੋੜ ਵਰਵਾਈ ਨਾ ਫੇਰ ਉਹ ਸ਼ਰਮ ਮਾਸ ਜਿਹੜੀ ਇਹ ਮਾਸ ਖਾਣਾ ਮਾਸ ਖਾਣਾ ਕਿਵੇਂ ਸਰੀਰ ਪਾਸੇ ਹੈ ਆਟੇ ਲੋੜ ਜੋ ਜਿਹੜਾ ਹੁਣ ਕੰਮ ਕਰਕੇ ਖੜਾਉਂਦੇ ਨੇ ਹੁਣ ਕਹਿੰਦੇ ਗਰੀਬਾਂ ਦਾ ਖੂਨ ਚੂਸਦੇ ਚੂਸਦਾ ਨਹੀਂ ਉਹ ਗਰੀਬਾਂ ਦੀ ਖਵਾਈ ਖੂਨ ਪੀਂਦੇ ਦੀ ਐ ਉਹ ਲੈ ਗਿਆ ਖੂਨ ਹੀ ਚੂਸ ਲਿਆ ਐਸਾ ਬਵਾਸ ਇਸ ਸੈਂਸ ਵਿੱਚ ਕੀ ਆਉਂਦਾ ਵੀ ਸੱਚੀ ਵਿੱਚ ਜੀ ਹਨ ਇਹਦੇ ਕਾ ਗਰੀਬਾਂ ਦਾ ਖੂਨ ਕਹਿੰਦੇ ਚੂਸਦਾ ਹੈ ਗਰੀਬਾਂ ਦੀ ਕਮਾਈ ਲੈ ਗਿਆ ਖੂਨ ਪਸੀਨੇ ਦੀ ਕਮਾਦ ਖਾ ਗਿਆ ਵਾਸੇ ਪਰ ਉਹ ਪਰਾਇਆ ਨਹੀਂ ਹੈ ਆਪਣਾ ਸਰਮ ਕਰਕੇ ਖਾਣਾ ਆਪਣਾ ਮਾਲ ਖਾਣਾ ਸਰਮ ਮਾਸਾ ਖਾਂਦਾ ਜਿਹੜਾ ਬਗਾਨਾ ਖਾਂਦਾ ਹੈ ਮੈਂ ਕਿਸੇ ਦੀ ਖਾਂਾ ਖਾਣਾ ਕਿਸੇ ਉਹ ਆਪਣਾ ਦਾ ਖਾਣਾ ਬਾਸ ਮਗਰ ਨਾ ਨਹੀਂ ਖਾਣੇ ਹੱਕ ਤੇ ਉਹ ਤਾਂ ਨਹੀਂ ਜਗਦਾ ਇਹ ਸਰਵ ਕਰਕੇ ਖਾਣਾ ਹੀ ਆਪਣੀ ਮਿਹਨਤ ਮਿਹਨਤ ਸਰਵ ਨਾਨਕਾ ਅੱਧੇ ਜਾਹਿ ਵਿਕਾਰ 8 ਘੰਟੇ ਕੁਰਸੀ ਤੇ ਬੈਠਣਾ ਵੀ ਸੌਖਾ ਨਹੀਂ ਹੈ ਹਾਂ ਟੋਕਾ ਟੋਕਾ ਉਹ ਜਿਹੜਾ ਬਾਹਰ ਬੈਠਾ ਆ ਜਿਹੜਾ ਪਹਿਲਾਂ ਉਹਨੂੰ ਪੁੱਛ ਕੇ ਦੇਖੋ ਹਾਂ ਗੁਰਮੁਖ ਪਾਈਏ ਨਾਨਕਾ ਖਾਦੇ ਜਹੇ ਬਿਕਾਰ ਗੁਰਮੁਖ ਪਾਈਏ ਨਾਨਕਾ ਇਹ ਜਿਹੜਾ ਸਭ ਕੁਝ ਹੈ ਗੁਰਮੁਖ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ ਇਹ ਸਭ ਆ ਜਿਹੜਾ ਪਿੱਛੋਂ ਦੱਸਿਆ ਨਾ ਉਹਦਾ ਸਾਡੇ ਸੰਸਾਰ ਕੋਲੇ ਪਹਿਲਾਂ ਹੁੰਦਾ ਤਾਂ ਉਹਦਾ ਹੈ ਇਹ ਲੋਰ ਬੋਖੋ ਗੁਣ ਮੰਡੇ ਕਰ ਤਿੰਨ ਕਰੋ ਬੋਖੋ ਪ੍ਰਾਪਤ ਹੁੰਦਾ ਹੁੰਦਾ ਕਰੂ ਕਿਸੇ ਕੋਲ ਪ੍ਰਾਪਤ ਹੁੰਦਾ ਇਹ ਤਾਂ ਬਿਲ ਦਾ ਬੋਖੋ ਹਾਲੂ ਬੰਦਾ ਇਹਦਾ ਐਸੇ ਚਾ ਉਦਾਇਆ ਪਾਈਏ ਨਾਨਕਾ ਪਾਈਏ ਨਾ ਖਾਦੇ ਇਹਨਾਂ ਦਾ ਪਾਇਆ ਜਾਂਦਾ ਬਸ ਇਹ ਖਾਦੇ ਤੇ ਜੇ ਇਹ ਸੌਦਾ ਖਾਵੇ ਨਾ ਬਕਾਰ ਸਾਰੀ ਘਟੋ ਜੇ ਵੇ ਸਪਰੇ ਕਰ ਦਿੰਦੇ ਆ ਘਾਹ ਫੂਸ ਮਰ ਜਾਂਦਾ ਨਾ ਸਾਰੇ ਬਕਾਰ ਵਕਾ ਤੇ ਸੁਪਰੇ ਐ ਸਮਝੋ ਦੁਰਮਤ ਸੁਪਰੇ ਰਿਆ ਦੁਰਮਤ ਸੁਪ ਮਰਦਾਨਾ ਮਹੱਲਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਿਸ ਤ੍ਰਿਸ਼ਨਾ ਧਾਤ ਮਨਸਾ ਕਾਇਆ ਕਾਇਆ ਲਾਹਣ ਜਿਹੜਾ ਅੰਦਰ ਹੈ ਮੰਦੇ ਅੰਦਰ ਹੈ ਅੰਦਰ ਐਸਾ ਕਾਇਆ ਕਹਿੰਦੇ ਜਿਹਨੂੰ ਮਨ ਮੰਦਰ ਉਹ ਅੰਦਰ ਕਾਇਆ ਹੈ ਉਹ ਜਗਾ ਸਾਫ ਕਰਦੇ ਅਸਰੀਰ ਹੈ ਜਿਹੜਾ ਮਾਇਆ ਬਸ ਜਦ ਮਾਇਆ ਨੂੰ ਕਾਇਆ ਬਣਾ ਲਿਆ ਨਾ ਕਾਇਆ ਉਹ શરીર ਨੂੰ ਬਾਹਰ ਨੂੰ ਕਾਇਆ ਕਿਹਾ ਠੀਕਾ ਕਰਨ ਦਾ ਮੰਨਿਆ ਉਹ ਨੇ ਤਾਂ ਮੰਨਿਆ ਸੀ ਅਸੀਂ ਕੱਲ ਮੰਨਣਾ ਸੀ ਕਾਇਆ আর ਮਾਇਆ ਦੋ ਚੀਜ਼ਾਂ ਡੱਡ ਨੇ ਕਾਇਆ ਚੇਤਨ ਸਰੀਰ ਦਾ ਉਹ ਮਾਇਆ ਜੜ ਸਰੀਰ ਦਾ ਤੋ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ ਕਾਇਆ ਲਾਗੜੇ ਜਿਵੇਂ ਲਾਹਣ ਦੇ ਵਿੱਚੋਂ ਵਾਧਾ ਹੋ ਆਪ ਹੈ ਆਪ ਮਨ ਮੈਂ ਆਪ ਆਪ ਮਜਲਸ ਤ੍ਰਿਸ਼ਨਾ ਧਾਤ ਮਨ ਵਿੱਚ ਆਪ ਹੈ ਉਹ ਆਪ ਵਾਧਾ ਆਕਾਸ਼ ਹੈ ਕਾਇਆ ਬਾਹਰ ਕਹਿ ਲੋ ਆਕਾਸ਼ ਹੈ ਤੇਰੇ ਵਿੱਚ ਕੀ ਹੈ ਵਿੱਚ ਰੋਸ਼ਨੀ ਹੈ ਲਾਈਟ ਆਫ ਕਰ ਦੋ ਫਿਰ ਵਿੱਚ ਨਹੀਂ ਰਹੇਗੀ ਇਹ ਰਹੂ ਨਾ ਥੋੜਾ ਬੋਤਾ ਜਿੰਨਾ ਵੀ ਉਹ ਚੱਲ ਹੋਊਗਾ ਇਹਦੇ ਨਾਲ ਇੱਥੇ ਆਉਣ ਕਰਾਵੇ ਫਿਰ ਕੀ ਵਿੱਚ ਮਿਖਸ ਹੋ ਗਿਆ ਲਾਈਟ ਜੋਤ ਐ ਵਰਵੇ ਆਪ ਆਪ ਜੋਤ ਕਾਇਆ ਲਾਹੋ ਆਪ ਮਦ ਮਜਲਿਸ ਮਦ ਸਪੇਸ ਵਿੱਚ ਉਹਦੇ ਜੋ ਰੋਸ਼ਨੀ ਹੈ ਰੋਸ਼ਨੀ ਦਾ ਹੀ ਨਸ਼ਾ ਜਿਹਨੂੰ ਵੀ ਹੋਇਆ ਤੇ ਦੇ ਕੈਨਰ ਸਭ ਮੈ ਚੱਲੇ ਸਭ ਮੈ ਚੰਨ ਹੋਏ ਸਭ ਮੈ ਚੰਨ ਨਾਲ ਸਾਰੀ ਕਾਇਆ ਚ ਚੰਨ ਉਹਦਾ ਹੀ ਕੀ ਆ ਵਿਚ ਚੰਨ ਆਪ ਕੀ ਆ ਕਾਇਆ ਦੇ ਕਹਿ ਰਿਹਾ ਉਹ ਵਰ ਮੈਂ ਆਪ ਮਜਲਸ ਤ੍ਰਿਸ਼ਨਾ ਧਾਤ ਪਾਇਆ 라ਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ ਮਜਲਸ ਕੀ ਹੈ ਨਾਲ ਕੀ ਹੈ ਉਹ ਆ ਬਹਾਲਾ ਸ਼ਰੀਰ ਮਾਇਆ ਸ਼ਰੀਰ ਤ੍ਰਿਸ਼ਨਾ ਚ ਭਜਿਆ ਫਿਰ ਇਹਦੀ ਜਿਹੜੀ ਭੁੱਖ ਪਿਆਸ ਵਾਸਤੇ ਭਜਦਾ ਮਨਸਾ ਕਟੋਰੀ ਕੂੜ ਭਰੀ ਲਾਏ ਜਮਕਾ ਦਾ ਚੇਤਨ ਤਦ ਸੱਚਾ ਬਾਹਰ ਝੂਠ ਹੈ ਝੂਠ ਮਗਰ ਲਗਿਆ ਝੂਠ ਸੱਤਰ ਜਿਆਦਾ ਧਿਆਨ ਝੂਠ ਤੇ ਮਨਸਾ ਕਟੋਰੀ ਖੂਨ ਭਰੀ ਖੂਨ ਭਰੀ ਪੀ ਲਾਇ ਜੰਮ ਕਰ ਸੱਚ ਛੱਡ ਕੇ ਤੂੰ ਤੂੰ ਝੂਠ ਮਗਰ ਲਾ ਅੰਦਲਾ ਸਰੀਰ ਤਿਆਰ ਜੇ ਤਾਂ ਅੰਦ ਆਪ ਸੀ ਹੋ ਜਿੱਥੇ ਆਪ ਹੈ ਆਪ ਮਨ ਜੀਵ ਆਪ ਹੈ ਆਪਣੇ ਘਰ ਦਾ ਫਿਕਰ ਦੀ ਆ ਜਿਹੜਾ ਘਰ ਬਾਰ ਨਾਲ ਇਹਦਾ ਆਪਣਾ ਨਹੀਂ ਹੈ ਮਾਇਦੀ ਕੁ ਟੋਕੀ ਦੀ ਆ ਇਹ ਨਹੀਂ ਇਹਦਾ ਰਹੇਗਾ ਇਹ ਤਾਂ ਕੋਈ ਕਿੰਸ ਇਹਦੇ ਵਾਲੇ ਨੇ ਆਪਣਾ ਘਰ ਸੁਖੀ ਕਰਨਾ ਘਰ ਜਿਹੜੀ ਕਵੀ ਹੈ ਨਾ ਘਰ ਦੀ ਘਰ ਵੀ ਜਿਹੜੀ ਕਵੀ ਹੈ ਇਹਦੇ ਘਾਟ ਹੈ ਪੂਰੀ ਕਰਦੀ ਭੁੱਖ ਪੂਰੀ ਕਰਦੀ ਇਹਦੇ ਆ ਘਾਟ ਪਹਿਲੋ ਪਹਿਲਾਂ ਘਾਟ ਪੂਰੀ ਕਰਨੀ ਸੀ ਘਾਟ ਮਹਿਸੂਸ ਜਾਂ ਹੌਲੀ ਸੀ ਇਹਨੂੰ ਜਿੱਦਣ ਘਾਟ ਮਹਿਸੂਸ ਹੋ ਉਹ ਘਾਟ ਭੁੱਖ ਵੱਢ ਜੂ ਜਿੱਦਣ ਪਤਾ ਲੱਗੂ ਘਾਟ ਕੀ ਹੈ ਮੈਂ ਕੀ ਕਰ ਰਹਾ ਉਹ ਘਾਟ ਨੇ ਭੁੱਖ ਵੱਢ ਸਾਡੇ ਚਾਲੀ ਘਟਦਾ ਪਿਆਸ ਬਣ ਜਾਂਦੀ ਹੈ ਰੋਟੀ ਦੀ ਭੁੱਖ ਵੱਢ ਜਾਂਦੀ ਹੈ ਜਿੱਦਣ ਇਹਨੂੰ ਘਾੜ ਦਾ ਪਤਾ ਲੱਗਿਆ ਮੇਰੇ ਵਿੱਚ ਕੀ ਹੈ ਉਦੋਂ ਉਹ ਨਾਲ ਦੀ ਭੁੱਖ ਜਾਗਣੀ ਹੈ ਮਨ ਸਾਹ ਅਲੇ ਸਰੀਰ ਦੀ ਭੁੱਖ ਦਾ ਇਸ ਕਰਕੇ ਆਵਰ ਖਾਏ ਤੇਰੇ ਕਿਤੇ ਨਾ ਕਾਮ ਤੂੰ ਤਾਂ ਅੰਦਰ ਤੇਰਾ ਸਰੀਰ ਅੰਦਰ ਲੈ ਬਾਹਰਲੇ خاطر ਸਭ ਕੁਝ ਕਰਦਾ ਅੰਦਰ ਵਾਲੇ خاطر ਕੀ ਕਰਦਾ ਆਪਣੇ ਖਾਤਰ ਕੀ ਕਰਦਾ ਆਪਣੇ ਖਾਤਰ ਕੀ ਕਰਦਾ ਜੇ ਤੇ ਤੂੰ ਬੈਠਾ ਉਹਦੇ ਆਲੇ ਵਾਲੇ ਕੀ ਰੱਖਿਆ ਤੇ ਲਿ ਜਾ ਕੇ ਆਪਣਾ ਤੂੰ ਕਿਉਂ ਟਾਈਟ ਹੁੰਦਾ ਜਾਂਦਾ ਹੈ ਕਿ ਹੁੰਦਾ ਜਾਂਦਾ ਜਗਾ ਘਟਦੀ ਜਾਂਦੀ ਹੈ ਬਹੁਤੀ ਜੜਾ ਫੈਲਦੀ ਜਾਂਦੀ ਤੇਰੇ ਜੋਗੀ ਤਾਂ ਜਗਾ ਸੀ ਮਸਾਂ ਉੱਤੇ ਥੋੜੀ ਪਹਿਲੇ ਜਗਾ ਘਟ ਸੀ ਤਾਂ ਜਿਹੜੇ ਉੱਪਰ ਬੂਟੇ ਬਾਹਰ ਆਏ ਤੇ ਜੜਾ ਉੱਥੇ ਦੇਖੋ ਨਾ ਕਿਤੇ ਜੜਾ ਜੇ ਉੜ ਤੇ ਜਗਾ ਤਾਂ ਕੀ ਉਹ ਟੈਟ ਹੋ ਰੋਗੇ ਗਏ ਉਹਦਾ ਕਾਇਆ ਅਡਮਡਡ ਹੋਣੇ ਪਰਲੇ ਕਾਇਆ ਦੇ ਵਿੱਚ ਜਿੰਨਾ ਫੈਲਦੀਆਂ ਫਲਾਣੇ ਦਿਲ 'ਚ ਜਗ੍ਹਾ ਨਹੀਂ ਰਹੀ ਆ ਮੋਟਾ ਟੱਜ ਜਾਂਦਾ ਅਪਗਣ ਦਿਲ 'ਚ ਜਗ੍ਹਾ ਨਹੀਂ ਰਹੀ ਜਗ੍ਹਾ ਜਾਂਦੀ ਹੈ दिल चो कटदा अ दिल चो कटदा अपने वास्ते हां अपने वास्ते ज्यादा कट दी जाती है बकारा वास्ते ज्यादा वदी है अपने वास्ते ज्यादा कट दीए मनसा कटोरी कूड़ भरी विलाए जमकाल विलाए जमकाल मनसा दी कटोरी है मन दी अच्छा वाले काहे शरीर वास्ते ਬਿਲਾ ਬਲਾਉਂਦਾ ਕੋਣ ਹੈ ਜਮਕਾਰ ਉਹੀ ਕਾਲ ਕਲਪੜ ਜਮਕਾਰ ਬਲਾਉਂਦਾ ਹੈ ਵੀ ਇਹ ਨੂੰ ਇਹ ਦੇ ਵਿੱਚ ਕੋਈ ਨਾ ਇੱਧਰ ਆਉਣ ਨਾ ਕਾਲ ਨੂੰ ਜਿੱਤੜਾ ਸੀ ਜਮਕਾਰ ਕਾਲ ਨੂੰ ਜਿੱਤੜਾ ਇਹਦੇ ਨਾਲ ਬਿਉਹਸ ਕੀਤਾ ਕਾਲ ਹੈ ਜੋ ਕਾਲ ਆਪਣੀ ਬੇਤੀ ਕਰ ਚਾਹੁੰਦਾ ਕਾਲ ਬੁਰਕਾ ਮਰਦਾਨ ਗਿਆ ਕਾਲ ਕਾਲ ਨੂੰ ਸੀ ਕਾਲ ਜਿੱਤਣ ਦਿੰਦਾ ਕਨੇ ਸਮਾ ਬਲਵਾਨ ਸਮਝਦਾ ਸਮੇਂ ਦਾ ਸਾਡੇ ਤੇ ਕੋਈ ਅਸਰ ਨਾ ਰਹੇ ਸਮਾ ਸਾਡਾ ਕੁਛ ਨਾ ਬੁਗਾਰ ਸਕੇ ਜਮੜ ਮਹਾਰਾਜ ਦੇ ਪੌਣ ਵਾਲਾ ਹੁਕਮ ਹੈ ਜਿਹੜਾ ਉੱਪਰ ਉੱਠਿਆ ਜਮੜ ਮਹਾਰਾਜ ਦੇ ਪੌਣ ਮਹਾਰਾਜ ਕੋਲੋਂ ਆਇਆ ਇਹ ਲਾਉ ਉੱਪਰ ਉੱਠ ਬੜਾ ਸ਼ਕਤੀਸ਼ਾਲੀ ਹਿਆ ਉਹ ਵੀ ਉਹਦਾ ਉਹ ਜਿਹੜਾ ਸੰਸਾਰ ਹੈ ਉਹਦਾ ਤੋੜ ਕੇ ਜਿਹੜਾ ਹੈ ਨਾ ਜੜ ਬਾਹਰ ਚਲੇ ਉਹ ਹੁਕਮ ਅੱਤੇ ਜੰਮਣ ਮੰਨਣਾ ਹੁਕਮ ਅੱਤੇ ਆਨੇ ਗਿਆ ਬਾਰੇ ਨੀ ਠੀਕ ਹੈ ਹੋ ਜੇ ਬਾੜੇ ਨਾਲ ਜੁੜ ਜਾਓਗੇ ਤਾਂ ਉਹ ਲਾਗੂ ਨਹੀਂ ਹੁੰਦਾ ਜੇ ਮੇਰੇ ਕੋਲ ਆਪਣੇ ਬਾੜੇ ਜਲੋਗੇ ਫਿਰ ਲਾਗੂ ਬੁਰਕਾ ਬਾੜੇ ਜਲੋ ਤੇ ਲਾਗੂ ਨਹੀਂ ਹੋਕਾ ਚੱਲਦਾ ਅਸੱਚੇ ਜਿਹੜਾ ਜੰਮਣ ਮਰਨ ਵਾਲਾ ਹੁਕਮ ਹੈ ਗੁਰ ਕੇ ਬਾਣੇ ਵਿੱਚ ਚਰਉਣ ਵਾਸਤੇ ਲਿਉਣ ਵਾਸਤੇ ਹੀ ਆ। ਅੱਛਾ। ਕੋਈ ਜਾ ਹੀ ਕੋਲ ਤੇ। ਪੜ ਲ ਜਾ ਗਿਆ। ਵੇ ਇਧਰ ਨੂੰ ਨਾ ਜਾਦੇ ਤੇ ਕੀ ਬਾਹਰ ਨਿਕਲੇ ਜਾਂਦੇ। ਜਿਹੜੇ ਨਾਲੇ ਖੀਲੀ ਨਾਲੇ ਖੜੇ ਨੇ। ਵੀ ਹੋਰ ਬਧੇ ਨੇ ਪਈ ਜਾਂਦੇ ਨੇ ਤੋ ਉਹਨਾਂ ਨੂੰ ਵੀ ਜਾ ਫੜਾ ਨੂੰ ਉਹਨਾਂ ਨੂੰ ਕਿਹਾ ਇਹ ਤਾਂ ਇਹਨਾਂ ਦੇ ਕੀ ਨੇ ਹਲਦੇ ਉਹ ਤਾਂ ਬਾਕੀ ਪੀ ਲਾ ਜਿਹੜੇ ਨੇ ਉਹ ਦੋਲੀ ਆਪਰੇ ਲੈ ਕੇ ਉਹਨਾਂ ਨੂੰ ਕੀ ਲੀਤੋ ਚੱਲੇ ਇਹ ਥੱਲੇ ਆ ਜੰਦੇ ਵੀਰ ਪਾਣਾ ਤਾਂ ਉਹ ਹੈ ਜਿਹੜੇ ਥੱਲੇ ਆ ਥੱਲੇ ਆ ਗਈ ਪੀਹ ਜਾਣੀ ਰੋੜੋੜਾ ਚੱਲਦਾ ਪਰੋਂ ਬਟਾ ਥੋੜੀ ਸੜਕ ਤੇ ਲਿਆ ਕੇ ਆਪਣੇ ਥੱਲੇ ਦਿੰਦਾ ਜਦੋਂ ਥੱਲੇ ਆ ਗਿਆ ਉਹ ਤੇ ਕੋਈ ਦੇ ਦਿੰਦਾ ਇਹ ਲੱਸਰੇ ਆ ਗਿਆ ਬੈਰੇਗੇ ਹਮ ਇਤਤ ਪੀਤਾ ਨਾਂਲਕਾ ਬਹੁਤ ਹੈ ਖੱਟੀਏ ਵਿਕਾਰ ਐਸੀ ਖੱਟੀ ਨਾ ਹੁੰਦੀ ਇਹ ਸਾਰੇ ਟੀਕਾਕਾਰਾਂ ਨੇ ਜਿਹੜੇ ਸ਼ਬਦ ਦੇ ਅਰਥ ਨੇ ਉਹ ਸਾਰੇ ਬਾਹਰੀ ਜਿਹੜੇ ਨਸ਼ੇ ਦੇ ਨਾਲ ਜੋੜੇ ਨੇ ਇਹ ਤਾਂ ਮਦਦ ਪੀਤੇ ਨਾਲ ਨੇ ਹੱਥ ਕੀਤੇ ਨੇ ਇਹਦੇ ਨਾਲ ਬੇਲ ਖਾਂਦੇ ਕਿਉਂ? ਨਾ ਬੇਜਾ ਦੇ ਨਾਲ ਬੇਲੇ ਨਹੀਂ ਖਾਂਦੇ ਹੱਥੇ ਤੇ ਕਿਵੇਂ ਆਪਾਂ ਕਹ ਜੀਏ? ਕਿਵੇਂ ਵਾਲੀ ਵੀ ਇਹਦੇ ਹੱਥ ਨੇ ਉਹ। ਕਹਿੰਦੇ ਖਾਂਦੇ। ਉਹਦੇ ਕਰਨ ਬੰਗਦਿਆਂ ਦੇ ਵਿੱਚ ਬਦ ਬਹੁਲਵਤਾਰ ਲਿਖਿਆ ਹੋਇਆ ਕਹਿੰਦੇ ਬਹੁਲਵਤਾਰ ਉਹਨੂੰ ਬਿਨੈ ਜਿਹਦਾ ਨਾ ਕੋਈ ਨਾਂ ਹੋਵੇ ਨਾ ਕੋਈ ਪਿੰਡ ਹੋਵੇ ਨਾ ਕੋਈ ਠਿਕਣਾ ਹੋਵੇ ਹੂੰ ਤੂੰ ਹੀ ਦੂਏ ਦੋਰੇ ਫਿਰ ਇਹ ਹੀ ਲਿਖਿਆ ਉਹਦਾ ਠਿਕਾਣਾ ਪਿੰਡ ਲੋਥੇ ਹੁੰਦਾ ਨਹੀਂ ਬਹੁਲਵਤਾਰ ਬਹੁਲਵਤਾਰ ਦੂਜੇ ਲੋਕ ਤੀਜੇ ਲੋਕ ਚੌਥੇ ਲੋਕ ਪੰਜਵੇਂ ਲੋਕ ਨੇ ਬਾਤ ਕਰਤੀ ਇਹਨਾਂ ਨੇ ਚੱਕ ਕੇ ਮਾਸ ਮੂਦੀ ਕਥਾ ਦੇਤੀ ਉਹ ਬਾਦੂ ਤੱਕ ਨੌ ਵੀ ਹੈ ਸ਼ਰਾਰਤ ਬੰਨੋਂ ਜਾਣ ਬੁੱਝ ਕੇ ਤਾਂ ਉਹਦੇ ਸ਼ਾਇਰ ਨਹੀਂ ਕੀਤਾ ਮੂਰਖਾਂ ਦੇ ਅੱਥ ਚ ਆ ਗਏ ਯਾ ਤਾਂ ਮੂਰਖੀ ਵੇਵਕੂਫ ਸੀ ਅਗਿਆਨੀ ਸੀ ਅੰਦਾ ਆਗੂ ਇਹ ਥੀਏ ਸਭ ਸਾਥ ਮੁਹਾਏ ਸਭ ਸਾਥ ਕੀ ਕਾ ਸਾਹ ਜਿਹੜਾ ਸਖ ਸੰਭਲ ਸੀ ਗੇਰਤੀ ਖੂਚ ਸਾਥ ਮੁਹਾਏ ਦਾ ਬੰਦੇ ਇਹੀ ਹੈ ਥੱਡੇ ਚ ਕੇ ਬਹਿ ਜਾਊਗਾ ਹਾਲਤ ਕਿ ਹੋਈ ਹੈ ਕਾਮਾਦ ਵੀ ਤਾਂ ਤੁਹਾਡੇ ਸਾਹਮਣੇ ਨੇ ਅੰਦਾ ਆਗੂ ਜੀ ਥੀਏ सब साथ ਵਹਾਈ ਇਸ ਪੰਕਤੀ ਨੂੰ ਪੜ ਲਓ ਤੇ ਇਹ ਟੀਕਾ ਪੜ ਲਓ ਆ ਪੜੀ ਪੜੋ ਉਹ ਬਿਲਕੁਲ ਸੱਚ ਉੱਤਰ ਦੀਏ ਰਿਜ਼ਲਟ ਵੀ ਤਾਂ ਉਹੀ ਆਇਆ ਹੋਇਆ ਹੈ ਜਿਹੜਾ ਸਾਥ ਵਹਾਈ ਵਾਲੀ ਗੱਲ ਹੈ ਜਿਹੋਣਾਂ ਨੇ ਅਰਥ ਇਹ ਕੀਤੇ ਨੇ ਤਾਂ ਰਿਜ਼ਲਟ ਵੀ ਤਾਂ ਉਹੀ ਉਹ ਹੈ ਡਰਾਈਵਿੰਗ ਜਾਣਦਾ ਹੀ ਨਹੀਂ ਪਹਾੜੀ ਦੇ ਦਾ ਕੋਲ ਜੀ ਵਾਹਾਈ ਦਾ ਹੋ ਗਿਆ ਉਹਨਾਂ ਲੈ ਕੇ ਵੀ ਆਈ ਸੀ ਉਹਨਾਂ ਦਾ ਕਰੋਧ ਦੀ ਕਟੋਰੀ ਹੈ ਇਹ ਕੰਮ ਦਾ ਮਦ ਇਹਦੇ ਖਿਲਾਫ ਅਭੀ ਹਣ ਚਲਾਉਂਦੀ ਸੀ ਇਹ ਦੇਖ ਲਾ ਇਹ ਦੇਖ ਲਾ ਜਦੋਂ ਅਸੀਂ ਧਰਮ ਵਿੱਚ ਇਹਨਾਂ ਨੂੰ ਵਿਕਾਰ ਬਣਦੇ ਦੇ ਇਹਨਾਂ ਵਿਕਾਰਾਂ ਦੀ ਗੱਲ ਹੈ ਇਹਨਾਂ ਦੇ ਦੀ ਗੱਲ ਹੈ ਇਹਦੇ ਖਿਲਾਫ ਕੀ ਲੜਾਈ ਆ ਅਸੀਂ ਲੜ ਖਿਲਾਫ ਮੋਹ ਕ੍ਰੋਧ ਲੋਹ ਮੋਹ ਹੰਕਾਰ ਦੇ ਖਿਲਾਫ ਕੀ ਲੜਾਈ ਹੈ ਤੁਹਾਡੀ ਦੱਸ ਲਕਰ ਬਹੁ ਭਰਿਆ ਹੋਰ ਲੜਦੇ ਲਦਰਵਾ ਭਰਿਆ ਮੈਂ ਸਾਧੂ ਖੰਡਲ ਖੰਡਾ ਕਰਨ ਵਾਲਾ ਤਾਂ ਕੰਮ ਸੀ ਕਰ ਰਹੇ ਹੋ ਇਹ ਨਹੀਂ ਕਰ ਰਹੇ ਬਸ ਸਿੱਖੀ ਕਰਦੀ ਹੈ ਕਹਦੇ ਸਿੱਖੀ ਕੌਣ ਕਹਿੰਦਾ ਸਿੱਖੀ ਹੈ ਐਵੇਂ ਤੁਸੀਂ ਰੌਲਾ ਪਾਈ ਜੋ ਵੀ ਸਿੱਖੀ ਹੈ ਸਿੱਖੀ ਹੈ ਹੀ ਨਹੀਂ ਬੰਲੀਆ ਬੱਕਾ ਦੇਖੀ ਬਸ ਨਾਲ ਕਿਸੇ ਨੇ ਟਕਾ ਨਹੀਂ ਕੀਤਾ ਜਿੱਦ ਤੱਕ ਪੁਰਣੀ ਕੱਕਾ ਕੀਤਾ ਕਰੇ ਅੰਗਰੇਜ਼ਾਂ ਦੇ ਰਾਜ ਦੌਰਾਨ ਨਾ ਕੋਈ ਕਰੇ ਸਿੱਖ ਸਿੱਖ ਪੜਨ ਤਾਂ ਕਾਇਰਾਂ ਨੂੰ ਕੋਈ ਨਹੀਂ ਕਰਦਾ ਉਜਮਾਨੇ ਗਏ ਐ ਤੱਕੇ ਉਜਮਾਨਾ ਉਸੀ ਉਹਨਾਂ ਦਾ ਰਾਜ ਧਰਮ ਦੇ ਆਧਾਰ ਰਾਜ ਸੀ ਹੋਰ ਗੱਲ ਸੀ ਅੱਜ ਜੇ ਸਿੱਖੀ ਦੀ ਗੱਲ ਕਰਨ ਇਹਨਾਂ ਦੀ ਇੱਜ਼ਤ ਹੋਊਗੀ ਕੋਈ ਇਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਕੀ ਕੋਈ ਨਹੀਂ ਕੱਟ ਰੋਗ ਰੋਗ ਤਾਂ ਹੈ ਚਲੋ ਪਰ ਗੁਰਦੁਆਰੇ ਦਾ ਹਸਤਾਲ ਨੇ ਉੱਥੇ ਰੋਗ ਵਧਾਇਆ ਜਾਂਦਾ ਡੀਕੇ ਦੂਏ ਚੁਜਾ ਲਾਏ ਜਾਂਦੇ ਨੇ ਅਗਰ ਤੁਹਾਡੇ ਹਸਤਾਲ ਜਾ ਕੇ ਕੀ ਹੋ ਰਿਹਾ ਹੈ ਗੁਰਦੁਆਰੇ ਜਾ ਕੀ ਹੋ ਰਿਹਾ ਉਹ ਦਸਵੀ ਰਹ ਰਹੇ ਨਾ ਖਾਇਆ ਕਰੋ ਇਹਦੇ ਨਾਲ ਬਿਵਾਰੀ ਬੰਦੀ ਇਹ ਵੀ ਕੋਈ ਕਹਿ ਰਿਹਾ ਉਥੇ ਦੀ ਪੁਰਤੀ ਕੀਤੀ ਜਾਂਦੀ ਮਨੋ ਪੂਰੀ ਉਹ ਦਸਵਾ ਦੱਬ ਕੇ ਖਾਓ ਪਰ ਉਹਨਾਂ ਕਰੋ ਉਹ ਤਾਂ ਉਲਟੀ ਪੜਾਈ ਪੜਾਈ ਜਾਂਦੀ ਹੈ ਸਿੱਖੀ ਦੀ ਪੜਾਈ ਹੈ ਕਿੱਥੇ ਤੁਸੋਂ ਪਹਿਲਾਂ ਡੇਢ ਹੋਰ ਸਿੱਖੀ ਸਿੱਖੀ ਦਾੜੇ ਕੋ ਹੈ ਕਿੱਥੇ ਸਿਰਫ ਪੇਹਰ ਤੋਂ ਸਮਾ ਕੁਝ ਨਹੀਂ ਪੇਹਰੂ ਇਸੇ ਹੀ ਰੀਏ ਪੇਹਰੂ ਇਸੇ ਹੀ ਦਾ ਸਗੁਰੂ ਗੁਰੂ ਸਾਰਾ ਕਿਹੋ ਜਿਹਾ ਬੇਸੇ ਉਹ ਵੀ ਸਹੀ ਰੀਏ ਸਾਡਾ ਆਪਣਾ ਬਣਾਇਆ ਹੋਇਆ ਵੀ ਸਹੀ ਨੇ ਬਾਗਾਂ ਵੀ ਸਾਡਾ ਆਪਣਾ ਬਣਾਇਆ ਹੈ ਯਾ ਯਾ ਸਭ ਨੂੰ ਸੂਤ ਬਣਾ ਲਿਆ ਵੇਂ ਨਾ ਕੇ ਰ ਘਰ ਦੇ ਮੱਧ ਸੇ ਰੱਖਣਾ ਜੀ ਉਹ ਸਾਡੀ ਮਰਜ਼ੀ ਆ ਉੱਥੇ ਵੀ ਇਹ ਤਮਦ ਪੀਤਾ ਨਾਨਕਾ ਬਹੁਤਾ ਖੱਟੀ ਹੈ ਬੁਕਾਰ ਜੇ ਬੁਕਾਰਾਂ ਦੀ ਖੱਟੀ ਕਰਦੀ ਆ ਵਾਦ ਭੀਲ ਨਹੀਂ ਐਸੇ ਗਿਆਨ ਗੁਰ ਸਲਾਹ ਮੰਡੇ ਭਾਉ ਮਾਸ ਆਹਾਰ ਗਿਆਨ ਗੁਰ ਸਲਾਹ ਮੰਡੇ ਭਾਉ ਮਾਸ ਆਹਾਰ ਮੈਂ ਜਿੱਲੀ ਦੇ ਕੈ ਜਿੱਲੀ ਵਧੀਆ ਸਿੱਖੀ ਸਾਰਿਆਂ ਨੂੰ ਮੈਂ ਸਮਝਦਾ ਹਾਂ ਪੰਜ-ਛੇ-ਸੱਤ ਸਾਲ ਹੋ ਗਏ ਮੈਨੂੰ ਜਾਂਦੇ ਨੇ। ਯਾਨੀ ਹੋ ਰਿਹਾ ਹਾਂ। ਲੱਗਦਾ ਬੜੀ ਕਾਲੀ ਗੱਲ। ਹੂੰ। ਇਹਦੇ ਨਾਲ ਸਿੱਕੀ ਤੋਂ ਕਿਰੁੰਦਾ ਗਰਾਪ ਸ਼ੁਰੂ ਹੋ ਗਿਆ। ਹੂੰ। ਸਹੀ ਹੈਗਾ ਨਾ ਬਾਹਰ। ਕਮਜ਼ੋਰ ਹੋਣਾ ਸ਼ੁਰੂ ਹੋ ਗਿਆ। ਇਤੋਂ ਮਾਨਸਿਕ ਦਸ਼ਾ ਕਿਰੁੰਦਾ ਖਰਾਬ ਸ਼ੁਰੂ ਹੈ। ਸ਼ੁਰੂ ਹੋ ਜਿੰਦੀ ਕਿਉਂ ਵੇ ਇਹ ਜਨ ਨੂੰ ਲੋੜ ਬੀ ਕਿਉਂ ਲੋੜ ਕੀ ਕਰੀ ਕੀ ਸ਼ਰਮ ਹੈ ਇਸ ਦਾ ਕੱਲ ਨੂੰ ਦਾੜੀ ਰੱਖਣ ਦੀ ਕੇ ਇਹ ਤਾਂ ਸ਼ਰਮ ਘਾ ਮਸਰ ਕੀ ਇਹ ਤਾਂ ਸ਼ੁਰੂ ਹੋਊਗੀ ਗੱਲ ਉਥੋਂ ਬਿਮਾਰੀ ਆ ਸ਼ੁਰੂ ਹੋ ਜੂ ਜੇ ਨਾਰੋਕ ਕਹਿ ਜਾਵੇ ਗਾਵਾ ਜੂ ਹ ਕੀ ਐਸੀ ਗੱਲ ਸੀ ਸਾਨੂੰ ਇਹ ਕਰ ਲਾ ਕੀ ਪ੍ਰੋਬਲਮ ਚ ਕਿਤੇ ਲੱਗ ਕਦੇ ਕੁਜ਼ੂਰੀ ਤੇ ਹਮ ਹੈ ਬੁਮਾਰੀ ਹਿਰੋ ਹੋ ਚੁੱਕੀ ਜਮਨ ਦੱਤਾ ਹੈ ਜੇ ਨਾਰੋ ਕਿਆ ਗਿਆ ਬਜੂਗੀ ਲਈ ਸੀ ਇੱਕ ਵਾਰ ਰਜਿਸਟਰ ਦੇ ਕਲਕੁਲਾ ਲਈ ਸੀ ਇੱਕ ਵਾਰ ਸ਼ਾ ਡੋਗਰੀਆਂ ਡੋਰ ਉਹਨਾਂ ਨੇ ਕਹਿਤਾ ਹੋਵੇ ਤਰ ਉਹਨੇ ਚਿੱਠੀ ਲੱਕੇ ਪੇਜੀ ਪਤਾ ਨਹੀਂ ਹੁੰਦਾ ਸਭ ਅੰਤਕਾਲ ਜੋ ਮਰਣਾ ਹੈ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ ਇਹਨਾਂ ਮਾਦੂ ਰੋਗ ਲੇਗਾ ਡਰ ਕੇ ਲੱਗਦਾ ਵੀ ਮੈਂ ਗੋਡਾ ਹੋ ਚੱਲਿਆ ਕਿਹੜੀ ਗਲਤੀ ਪਹਿਲਾਂ ਮਾਦੂ ਰੋਗ ਲੇਗਾ ਅੰਦਰ ਤੈਨੂੰ ਆਈਦਾ ਨੇ ਤੂੰ ਗਾਦੇ ਨਾ ਨੂੰ ਉਹ ਕਾਲਾ ਕਰਦਾ ਹਾਂ ਹਾਂ ਨਹੀਂ ਕਰੇ ਤੂੰ ਕਾਲਾ ਕਰਕੇ ਵਰਦਾ ਆ ਕੀਤਾ ਹੂੰ ਦਾਗ ਲੰਦਾ ਹਾਂ ਦਾਗ ਲੱਗਦਾ ਇਸ ਕਰਕੇ ਅੱਛਾ ਖਾਲਜੇ ਜਿਹਨੂੰ ਕਹਿੰਦੇ ਨੇ ਹੀਰੇ ਤੋੜਦੇ ਨੇ ਹੀਰੇ ਕਹਿੰਦੇ ਨੇ ਹੀਰੇ ਆਗੇ ਹਾਂ ਇਹ ਰੇਹਣ ਨੇ ਇਹ ਇੱਟੇ ਕਹਿੰਦੇ ਦੱਸ ਹੂੰ ਹੋਈ ਰਹਿਣ ਦੀ ਜਿੱਤ ਕਰਦੇ ਨੇ ਜਿੱਦਣ ਦੇ ਨਾ ਤਾਂ ਇਹ ਰੇਹੇ ਰੇਹੇ ਹੂੰ ਹੂੰ ਵੀ ਸਿਆਣਾ ਮਨ ਆ ਤੇ ਉਹ ਇੱਕ ਵਾਰ ਤੀਜੇ ਪਾਸ਼ਾ ਨਾਲ ਸਾਥੀ ਕੀ ਜੋੜੀ ਗਈ ਕੋਈ ਬੰਦਾ ਸੀ ਉਹਦੇ ਇੱਕ ਤੋੜਾ ਆ ਗਿਆ ਉਹ ਉਹ ਹੁੰਦਾ ਸੀ ਕੀਗੇ ਨਾ ਰਸਮ ਪਾਛਣੇ ਉਹਨੂੰ ਜਦੋਂ ਤੀਜੇ ਬਾਸ਼ਾ ਬਲੇ ਬੈਦੋ ਦਾ ਸੀ ਪੂਰੇ ਪੰਜ ਚਾਰ ਜੜੇ ਆਦਮੀ ਨੇ ਕਹੇ ਤੇ ਉਹਲਾ ਫੜ ਦਿੱਤਾ ਕਢ ਦਿੱਤੇ 2000 ਬਾਣ ਜਿਹੜੇ ਕੋਹ ਲੋ 2000 ਉਹ ਜਾ ਕੇ ਬਹਿ ਗਏ ਉਹ ਨੇ ਕਹੇ ਇਹ ਨੂੰ ਜਿਹੜਾ ਬੰਦਾ ਉਹ ਪਿੱਛੇ ਵੜ ਜਾ। ਸੋਤੋਕ। ਸੋਤੋਕ। ਉਹ ਗੱਨੇ ਵੀ ਪਾਈ ਸਖਾ ਚ ਉੱਠ ਕੇ ਪਿੱਛੇ ਵੜ ਜਾ। ਕਹਿੰਦਾ ਜੀ ਮੈਂ ਤਾਂ ਰੋਜ ਇੱਥੇ ਬੈਣਾ। ਕਹਿੰਦਾ ਤੂੰ ਵੈਨੇ ਸਰੂ ਕੀ ਪਤਾ ਹੈ ਪਰ ਅੱਜ ਗੁਰੂ ਸਾਹਿਬ ਦਾ ਹੁਕਮ। ਤੂੰ ਪਿੱਛੇ ਵੜ ਜਾ। ਗੁਰੂ ਸਾਹਿਬ ਨੇ ਕਿਹਾ। ਸੱਚੀ ਹੁਕਮ ਹੈ ਆਪਣੇ ਆਪ ਕਹਿੰਦੇ ਆਪਣੇ ਮੇਰੀ ਜਗ੍ਹਾ ਲੱਟਣ ਹੁੰਦਾ ਹੈ ਜ। ਕੁਕੜਾ ਜਿਹਾ ਸਪੀਕਰਸ ਬਿਫੋਰ ਆਉਦਾ ਜੀ ਸੀ ਉਹ ਨਾਲੇ ਸ਼ਰਕ ਕਰਤਾ ਉਹ ਯਾਥੀ ਉਹ ਕਹਿੰਦਾ ਕਾਰਨ ਕੀ ਹੈ ਕਹਿੰਦਾ ਭਾਈ ਤੇਰੇ ਕੋ ਉਹ ਜਿਹੜਾ ਨਾ ਸਾਡੇ ਫਿਰਸੇ ਅਜ ਹੈ ਨਹੀਂ ਇੱਥੇ ਬੈਠਣ ਵਾਲਾ ਤੇਰੇ ਕੋ ਜਿਹੜਾ ਸਹੀ ਨਾ ਸਦਾਵਾਜ ਹੈ ਨਹੀਂ ਹੂੰ ਇਹ ਸਮਝਿਆ ਕੀ ਗੱਲ ਕਦੇ ਸਿਆਣਿਆਂ ਦੀ ਜਗ੍ਹਾ ਬੈਠਣ ਦੀ ਮੂਰੇ ਨਿਆਣੇ ਪਿੱਛੇ ਬੈਨੇ ਹੁੰਦੇ। ਜੇ ਸਿਆਣੇ ਆਦਮੀ ਜਦੋਂ ਨਾ ਮੂਰੇ ਹੁੰਦੇ ਨੇ ਨਾ ਨਿਆਣੇ ਪਿੱਛੇ ਹੁੰਦੇ। ਫਿਰ ਕੁਝ ਸਮਝ ਗਿਆ ਥੋੜੀ ਜਿਹੀ ਗੱਲ। ਪਿੱਛੇ ਬਹਿ ਗਿਆ। ਬਾਅਦ ਚ ਫਿਰ ਕਹਿੰਦਾ ਵੀ ਮੈਂ ਪੂਰੀ ਤਸੱਦੀ ਨਹੀਂ ਹੋਈ ਦੁਸੀ ਕੀ। ਚਲੇ ਜਾਂਦੇ ਸੀ ਕਦੇ ਵੀ ਚਲੇ ਜਾਂਦੇ ਨਹੀਂ ਸੀ। ਵੀ ਜਿਹੜੀ ਤੋਂ ਗੱਲ ਦੀ ਸ਼ੰਕਾ ਤੇ ਤੇ ਪੁੱਛਣੇ ਜਾ ਕੇ ਆਏ ਨਹੀਂ ਸੀ ਕੋਈ ਗੱਲ ਫਿਰ ਉਹ ਸਭ ਤੇਰੇ ਹੀ ਰਹੇ ਹੁੰਦਾ ਜੇ ਕਥੇ ਗਏ ਫਿਰ ਵੀ ਇਹ ਅਪਰਾਧ ਹੈ ਉਹ ਜਿਹੜਾ ਉਹ ਲਿਖਦਾ ਦਸਮ ਪਾਸ਼ਾ ਨੇ ਕਿਹਾ ਪਰ ਸੋ ਦੇ ਖ਼ਵਾਰ ਚ ਵੀ ਉਹਨੂੰ ਕੋਈ ਕੇਸ ਨਹੀਂ ਕੱਟੂਗਾ ਹੁਕੂਮਨਾਮਾ ਜਾਰੀ ਕੀਤਾ 1995 ਦੀ ਗਲਤਨਾ 1995 ਦੇ ਵਿੱਚ ਸਭ ਝੂਠ ਲਿਖਦਾ ਉਸ ਇਦਾਂ ਲਾਉ ਤੋਂ ਪਹਿਲਾਂ ਕੇਸ ਕਟਾਉਂਦੇ ਸੀ। ਤਾਂ ਸੀ। ਉਹਦਾ ਕੀ ਬਣੂਗਾ ਜਿਹੜਾ ਸਾਡਾ ਉੱਥੇ ਟੁੱਟਾ ਹੋਇਆ ਹੈ। ਹਾਈ ਕੋਰਟ। ਇੱਟਾ ਭੋਗਸ ਆਦਮੀ ਹੈ ਇਹਦੀਆਂ ਗਲਤ ਗੱਲਾਂ ਲਿਖਦਾ ਹੈ। ਪਿੱਛੇ ਕੱਟ ਮੇਰੇ ਸਿਰ ਵੱਢ ਦੇ। ਉਹ ਮਹਾਬਲ ਰੁਕਮੜਾ ਭਾਈ ਜਿਹੜਾ ਜਿਹੜੇ ਹਥਿਆਰ ਨਾਲ ਉਹਦਾ ਸਿਰ ਵੱਢਣਾ ਹੈ ਜੇ ਉਸੇ ਹਥਿਆਰ ਨਾਲ ਉਹਨੇ ਕੇਸ ਕੱਟ ਲਈਏ ਤਾਂ ਉਹ ਸਿਰ ਵੱਢਣ ਬਰਾਬਰ ਹੈ ਇੰਨੀ ਬੇਇੱਜ਼ਤੀ ਹੈ ਧਰਮ ਦੇ ਖੇਤਰ ਜੀ ਮੰਨੀ ਜਾਂਦੀ ਪੁਰਾਣੇ ਜ਼ਮਾਨੇ ਸਮਾਜ ਦੇ ਖੇਤਰ ਵੀ ਛੱਡੋ ਸਮਾਜ ਦੇ ਖੇਤਰ ਉਹਦੇ ਬੰਦੀ ਬਣਾਉਂਦੇ ਸੀ ਰਾਜਪੂਤਾਂ ਦੀਆਂ ਮੁੱਛਾਂ ਮੰਨ ਕੇ ਘਰ ਰੱਖ ਲੈਂਦੇ ਸੀ ਸਰਨੇ ਬਰੋ ਰਾਜਪੂਤਾ ਦੀ ਬੁੱਛ ਦੀ ਕੀਵਤ ਹੋ ਗਈ ਸੀ ਰਾਜਪੂਤਾ ਦੇ ਰਾਜ ਉਹ ਕਹਿੰਦਾ ਦੀ ਮੋਚ ਪਟਕੇ ਇਹਨੂੰ ਛੱਡ ਦੋ ਇੱਕ ਮੋਚ ਪਟ ਲੈਣੀ ਕੀ ਛੱਡਦੇ ਉਹਨੂੰ ਬਣਾਉਣੀ ਪੈਣੀ ਦੋ ਹੀ ਦਾੜੀ ਬਣਾਉਗਾ ਕਿਉਂਕਿ ਜਿਹੜੇ ਬਹੁਤ ਜਿਹੜਾ ਬੋਸਲਵਾਰ ਮੁਸਲਮਾਨ ਜਿਹੜੇ ਉਹ ਬੁੱਛਾ ਬਣਾ ਲੈਂਦੇ ਦਾੜੀ ਹੁੰਦੀ ਆ ਉਹਦੇ ਵਿੱਚ ਪੁਜੇਦਾ ਮੁੱਛਾ ਬਣਾਉਂਦਾ ਦੋਏ ਦਾੜੀ ਰੱਖਦਾ ਮੁਸਲਮਾਨ ਸਾਬ ਤੋਂ ਦਾ ਏਡੀ ਪ੍ਰੋਬਲਮ ਖੜੀ ਕਰਦੇ ਨਹੀਂ ਉਹਨੂੰ ਉਹ ਦਾੜੀ ਬਰੋਦਾ ਤਾਂ ਫਿਰ ਉਹ ਕਹਿੰਦੇ ਨੇ ਦਾੜੀ ਜਿਹੜੀ ਨਿਸ਼ਾਨੀ ਹੈ ਦਾੜੀ ਮੁੱਛਾ ਨਿਸ਼ਾਨੀ ਹੈ ਮਰਦ ਦੀ ਉਹ ਇਹ ਪ੍ਰਚਲਿਤ ਸੀ ਹੈ ਦੇਖੋ ਸਰਾ ਤੇ ਉਹ ਗੁਜ਼ਰਾ ਮੰਨਦਾ ਨਾ ਜਿਉਂਦੇ ਆਂ ਚ ਨ ਮਰੇ ਹਾਂ ਕਹਿੰਦਾ ਮੈਨੂੰ ਮਾਰ ਦੋ ਵੱਡ ਸਰਵਡਰੋ ਮੇਰਾ ਇਹ ਨਾ ਤਰਸੇ ਕੱਲੇ ਬਾੜ ਦਾ ਵੱਡੋ ਉਹ ਕਹਿੰਦੇ ਭਾਈ ਇੰਨਾ ਹੀ ਹੋ ਕੋਈ ਸੰਨ ਮੈਂ ਵੀ ਕਹਿੰਦਾ ਫੜੋਂ ਮੁੰਨੇ ਆ ਗਿਆ ਠੱਗੇਗੇ ਨੂੰ ਮੁੰਨੇ ਮੀਲ ਉਰੇ ਆਪਣੀ ਰਾਜਧਾਨੀ ਜੋ ਘਰ ਨਹੀਂ ਗਿਆ ਮੁੜ ਕੇ ساری ਜ਼ਿੰਦਗੀ ਉਸਿਆਤ ਹੀ ਨਹੀਂ ਰੁਕ ਮੜੇ ਕ੍ਰਿਸ਼ਨ ਦਾ ਸਾਲਾ ਰੁਕ ਜਾ ਰੁਕਮਣੀ ਨੂੰ ਕ੍ਰਿਸ਼ਨ ਲੈ ਕੇ ਆਇਆ ਭਜਾ ਰੁਕਮਣੀ ਨੂੰ ਆਹ ਰੁਪਿਆ ਲੈ ਕੇ ਕ੍ਰਿਸ਼ਨ ਲੈ ਕੇ ਆਇਆ ਤਾਂ ਉਹ ਸਾੜੇ ਨੇ ਉਹਦਾ ਪਿੱਛਾ ਕੀਤਾ ਕ੍ਰਿਸ਼ਨ ਆ ਕੇ ਆਪਣੇ ਸ਼ਹਿਰ ਚ ਆ ਗਿਆ ਮੈਨਾ ਚ ਆ ਗਿਆ ਤੇ ਉਹ ਬਲਪਦਰ ਨੂੰ ਕਿਹਾ ਵੀ ਮੇਰੇ ਪਿੱਛੇ ਖੌ ਜੜੀ ਆਉਦੀ ਹੈ ਤੂੰ ਉਹਨਾਂ ਦਾ ਮੁਕਾਬਲਾ ਕਰ ਬਲਪੱਧਰ ਦੇ ਮੁਕਾਬਲਾ ਕੀਤਾ ਉਨ ਜੋਦਾ ਫੜ ਲਿਆ ਰੁਕ ਮੁਰ ਨੂੰ ਜੋਦਾ ਹੀ ਫੜ ਲਿਆ ਕੋਲੇ ਬੰਦੇ ਲੈ ਕੇ ਆ ਬਲਪੱਧਾ ਦਾ ਪੜ ਰਹੇ ਸੀ ਵੀ ਜਿਹੜੇ ਮੈਂ ਆਪਣੇ ਤੋਂ ਲੜੂਗਾ ਜਿਹੜੇ ਮੈਂ ਉਹਦਾ ਸਰਵਣੂ ਤਾਂ ਵੀ ਵੜਦੇ ਨੇ ਨਹੀਂ ਤਾਂ ਉਹ ਜੰਗ ਚ ਬਾਹਰ ਦਾ ਖੈਰ ਉਹ ਲੈ ਉਹਦੇ ਸਪਾਗੀਆਂ ਕੁੱਲੀ ਜੋਦਾ ਹੀ ਫੜ ਲਿਆ ਉਹ ਕਹਣਾ ਮੈਂ ਮੁਰਣਾ ਰੁਕਮਣੀ ਦਾ ਵੀ ਮੇਰਾ ਭਾਈ ਆ ਵੀ ਚਲੋ ਥੱਥੋਂ ਗੁੱਸੇ ਚ ਆ ਗਿਆ ਕਾਨੂੰ ਮਾਰ ਰਿਹਾ ਹੈ ਲੈਣ ਲੋਕੀ ਛੱਲੇ ਵੀ ਕੋਈ ਨਹੀਂ ਇਹ ਪਖਾਣੂ ਮਾਰਨ ਉਹ ਕਹਦਾ ਵੀ ਮੇਰਾ ਪਰਣਾ ਮੈਂ ਤਾਂ ਕੁਛ ਕਲੇਬਤ ਮੈਂ ਧਾਰਮਿਕ ਸੰਕਟ ਪੈਦਾ ਹੋ ਗਿਆ ਉਹ ਕੁਛ ਨਹੀਂ ਸੀ ਧਾਰਮਿਕ ਸੰਕਟ ਉਹ ਰਿਉਨੁ ਸ਼ਾਸਤਰ ਵਿੱਚ ਦਿਖਾਤਾ ਵੀ ਜੇ ਕਿਸੇ ਨੂੰ ਮਾਰ ਹੋਵੇ ਸਿਰ ਵੱਟ ਹੋਵੇ ਉਹਦੇ ਉਸਿਆ ਤੇ ਆਨੇ ਕੇਸ ਕੱਟ ਲਿਆ ਤੇ ਸਰਬਤਰ ਬਰਾਬਰ ਉਹ ਤਾਂ ਸੈਟੀਸਫਾਈ ਹੋ ਗਿਆ ਵੀ ਠੀਕ ਹੈ ਜੇ ਧਰਮ ਦੇ ਵਿੱਚ ਇਹ ਸੰਕਟ ਦਾ ਮਸਲਾ ਹੈ ਤਾਂ ਉਹ ਸੰਕਟ ਦਾ ਜਿਹੜਾ ਸਮਾਧਾਨ ਹੈਗਾ ਸੁਭਾਦ ਹੈ ਧਰਮ ਸ਼ਾਸਤਰ ਚੋਂ ਹੀ ਹੋਊਗਾ ਉਹ ਬੰਦ ਉਹਦੇ ਆਧਾਰ ਤੇ ਉਹਦੇ ਕੇਸ ਕੱਟੇ ਗਏ ਸੀ ਉਹ ਕਹਿੰਦਾ ਫਿਰ ਸਰਚ ਆਏ ਵੱਡੋ ਕੇਸ ਨਾ ਬ੍ਰਿਤੀ ਇਹ ਕੋਈ ਆਦਮੀ ਫੌਜੀ ਹੈ ਉਹ ਸਰਿੰਡਰ ਕਰ ਜਾਂਦਾ ਉਹ ਬਹੁਤ ਮੁਝੰਗਾ ਸਮਝਦਾ ਕਈ ਵਾਰ ਇਹ ਤਾਂ ਇਹ ਉਹਨਾਂ ਮਹੱਤਵ ਹੈ ਦੇ ਉੱਤੇ ਸਾਰੇ ਜਿਹੜੀ ਹੈ ਧਰਮ ਇੱਕਮਤ ਨੇ ਕੇਸ ਨਹੀਂ ਘਟਾਇਆ ਜੋ ਸਰੀਰ ਸਰੂਪ ਪਰਮੇਸ਼ਰ ਨੇ ਦਿੱਤਾ ਹੈ ਉਹਨੂੰ ਹੂ ਬੂ ਰੱਖਣਾ ਉਦੇਚ ਕੋਈ ਛੇ ਮਤਲਬ ਦਰਸ਼ਕੀ ਨਹੀਂ ਕਰਦੀ ਬਾਹਰ ਰੂਪ ਕਰਨੀ ਹੈ ਤੁਸੀਂ ਤਾਂ ਤਾਂ ਤੁਹਾਡਾ ਪਹਿਲਾਂ ਤੇ ਕਮੀ ਡਿਵੈਲਪ ਕਰ ਤੁਸੀਂ ਅੰਦਰ ਆਤਮਾ ਤਬਦੀਲ ਕਰਨੀ ਹੈ ਬਾਹਲੇ ਹੀਰ ਨੂੰ ਕੋਈ ਛੇੜਛਾੜ ਕਰਨੀ ਦੀ ਤਾਂ ਲੋੜ ਨਹੀਂ कोई ਲੋੜ नहीं ਹੈ ਕਿ ਉਹ ਤਾਂ ਠੀਕ ਹੈ ਕਿਉਂਕਿ ਨਾ ਕਿ ਚੋਚ ਮਾਟੀ ਕੇ ਭੰਡੇ पोच कुमारे ਚੋਚ ਘੁਮਾਰੇ ਲਗਣ ਤੋਂ ਇਹ ਹੀ ਗੱਲ ਸੀ ਕੋਈ ਇਹਦਾ ਭਾਵ ਵੀ ਇਹਦੇ ਨਾਲ ਛੇੜ ਸਾਡੀ ਇਹਦੇ ਵਾਰ ਧਿਆਨ मुद्दे ਤਾਂ ਅਸਲ ਮੁੱਦੇ ਤੋਂ ਧਿਆਨ ਚਲਾ ਜਾਊਗਾ ਨਵੀਂ ਬਹਿਸ ਦਾ ਇੱਕ ਮਸਲਾ ਪੈਦਾ పేగ్ બનાયા ਤਾਂ پیدا ہوئے వక్రే వక్రే अपने apne apne pehsun justify karde ne apne apne marzi nu justify karde ne kise pehsun करना karna apni marzi nu justify karna es karke asli khals nu pehsun nahi bande ko nu peh peejun chashmba jan de ਜੇ ਤੁਸੀਂ ਇਹਨੂੰ ਪੇਲ ਤਾੜਨ ਕਰਕੇ ਬਣਾਓਗੇ ਤਾਂ ਦਸਮ ਬਾਸ਼ਾ ਕਾ ਜ ਮੇਨ ਨੂੰ ਜੂਰ ਨਹੀਂ ਇਹ ਵਰਦੀ ਵਰਦੀ ਹੋ ਚੀਤ ਪੇਗ ਨਹੀਂ ਧਰਮ ਕਿਸੇ ਦਾ ਮੁਸਲਮਾਨ ਹੋਵੇ Hindu ਹੋਵੇ ਕੁਛ ਵੀ ਹੋਵੇ ਵਰਦੀ ਫੌਜ ਦੀ ਕੋਈ ਹੈ ਨਾ ਤੇ ਫੌਜ ਦੀ ਵਰਦੀ ਫੌਜ ਨੂੰ ਇਹ ਕਪੜਾ ਮੈਨੂੰ ਫੌਜੀ ਨੂੰ ਉਹੀ ਵਰਦੀ ਮਿਲੂਗਾ ਕੋਈ ਨਾ ਸਿੱਕਾ ਫੇਰ ਵੀ ਉਹੀ ਵਰਦੀ ਆਉਦੀ ਰਾਮੋ ਦਾ ਹੋਈਏ ਉਸਮਾਨਾ ਤਾਂ ਵੀ ਉਹੀ ਵਰਦੀ ਵਰਦੀ ਦਾ ਉਹਦੇ ਤੁਹਾਨੂੰ ਨਾਲ ਕੀ ਸੰਬੰਧ ਜੇ ਵਰਦੀ ਬਦਲ ਸਕਦੇ ਸੀ ਉਹ ਮੁਸਲਮਾਨ ਵੀ ਸਾਡੀ ਪਰ ਤੁਹਾਨੂੰ ਨਹੀਂ ਜੀ ਬਦਲ ਸਕਦੇ ਰਮਰ ਤੇ ਨਹੀਂ ਸਕੋ ਪਰ ਤੁਹਾਨੂੰ ਜੀ ਹੀ ਰੱਖੋ ਸੱਤੇ ਲੜਰੋ ਰੋਦਰੋ ਜਟਾ ਜੋੜ ਰਹਿਣਾ ਉਹ ਬਾਹਰਲਾ ਸ਼ੀਰ ਤੇ ਬਦਲਦਾ ਹੀ ਨਹੀਂ ਤੇ ਉਹ ਵੀ ਨਹੀਂ ਆਉਂਦੇ ਬਦਲਣਾ ਬਾਅਦ ਚ ਬਦਲਦੇ ਨੇ ਉਹਨਾਂ ਸਾਰੇ ਤੁਹਾਨੂੰ ਇੱਕ ਗੱਲ ਨੇ ਵਿਵਹਰਤ ਵੀ ਇੱਕ ਗੱਲ ਨੇ ਵੀ ਚੀਜ਼ਾਂ ਦੀ ਬਹੁਤੀ ਗੱਲ ਸੀ ਮੇਕੇ ਸਾਰੇ ਸਹਿਮਤ ਸਹਿਮਤ ਦੋ ਹੀ ਗੱਲਾਂ ਸੀ ਬਸ ਬਾਕੀ ਤਲਵਾਰ ਦਾ ਜਾਂ ਪਾਈ ਆਪਾਂ ਲੜਾਂਗੇ ਸਾਨੂੰ ਰੋਡ ਪਾਉਗੇ ਉਹਨਰ ਵੀ ਲੋਰ ਦੀ ਬੁਰਮਾਨਾ ਕੋ ਕਿਹੜਾ ਕਰਵਾ ਰਹੀ ਸੀ ਕਿ ਅਥਾਰ ਤੋਂ ਉਹਨਾਂ ਕੋਲ ਵੀ ਸੀ ਸਾਡੇ ਕੋਲ ਵੀ ਕੁਸ਼ਾਇਰਾ ਕੇ ਸਾਨੂੰ ਪਾਉਣੇ ਪਾ ਲੋ ਨਹੀਂ ਤੁਸੀਂ ਪਾਉਣੇ ਤੋਤੀ ਪਾਉਣੇ ਉਹਦੀ ਤੋਤੀ ਪਾਓ ਜਿਹੜਾ ਤਾਂ ਕੋਈ ਫਰਕ ਨਹੀਂ ਪਰ ਜਿਹੜਾ ਰਾਮ ਦਾ ਵਰਦੀ ਦਾ ਰਾਮ ਦਾ ਆਪਣੇ ਪਰਾਇ ਦਾ ਪਤਾ ਲੱਗਦਾ ਆਪਣਾ ਵੀ ਬੰਦਾ ਮਾਰਿਆ ਜਾ ਸਕਦਾ ਉਹ ਟੀਮ ਦੀ ਵਰਦੀ ਇੱਕ ਹੁੰਦੀ ਹੈ ਫੁੱਟਬਾਲ ਖੇਡੇ ਨਾ ਕਿ ਖੇਡੇ ਕਿਉਂ ਦੀ ਹੋਰ ਦੀ ਵਰਦੀ ਵੀ ਤਾਂ ਹੀ ਹੁੰਦੀ ਹੈ ਬਹੁਤ ਛੇਤੀ ਚ ਪਤਾ ਨਹੀਂ ਲੱਗਦਾ ਹੈਗਾ ਵੀ ਆਪਣੇ ਪਾਸ ਦਿਨ ਹੋਵੇ ਦੂਰੂ